ਸ਼ਲੋਕ ਮਹਲਾ 3 ਇਹ ਜਗਤ ਜੀਵਤ ਮਰੈ ਜਾਂ ਇਸਨੂੰ ਸੋਝੀ ਹੋਏ ਜਾਂਤ ਨਹੀਂ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਸਤਿਗੁਰ ਮਿਲੈ ਸੋਏ ਗੁਰਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਇਹ ਅੱਜ ਦੀ ਵਿਚਾਰ ਵਿਹਾਗੜਾ ਰਾਗ ਵਿਹਾਗੜਾ ਮਹੱਲਾ ਚੌਥਾ ਦੀ 16ਵੀਂ ਪੌੜੀ ਦੀ ਵਿਚਾਰ ਪੰਨਾ 554 ਤੇ ਮਹਲਾ 3 ਜਾ ਇਹ ਜਗਤ ਜੀਵਤ ਮਰ ਹੈ ਜਾਂ ਇਸ ਨੂੰ ਸੋਝੀ ਹੋਏ ਜਗਤ ਹੈ ਜਿਹੜਾ ਹੈ ਸੰਸਾਰ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਹੈ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਹੈ ਜਗਤ ਦਾ ਇੱਕ 파ਰਟ ਹੈ ਉਹ ਜਗਤ ਦਾ ਹਿੱਸਾ ਉਹਨੂੰ ਕੱਲੇ ਨੂੰ ਵੀ ਜਗਤ ਕਹਿ ਸਕਦੇ ਆਂ ਬੰਦਰ ਨੂੰ ਵੀ ਅਸੀਂ ਪਾਣੀ ਕਹਿ ਸਕਦੇ ਆ ਕਬੂਤਰ ਨੂੰ ਵੀ ਪਾਣੀ ਕਹਿ ਸਕਦੇ ਆ ਜੈਬੂਲ ਦਾ ਇੱਕ ਨੂੰ ਪਾਣੀ ਤਾਂ ਕਹਿ ਸਕਦੇ ਆ ਸੈਂਸ ਵਿੱਚ ਕਿਸੇ ਵੀ ਵਿਅਕਤੀ ਨੂੰ ਹੋਸੀ ਜਾਂ ਕਹਿ ਸਕਦੇ ਆ ਜਗਤ ਪਸ਼ੂ ਅਨਕਾਲ ਕਸਾਈ ਪਸ਼ੂ ਕਹਤਾਂ ਪਸ਼ੂ ਇੱਕ ਮਤਰਾ ਹੈ ਸ਼ਰੀਰ ਨਾਲ ਜਨਾਂ ਚ ਜੁੜਿਆ ਹੋਇਆ ਆਪਣੇ ਆਪ ਨੂੰ ਸ਼ਰੀਰ ਸਮਝਦਾ ਹੈ ਤੇ ਅਵਾਰ ਸ਼ਰੀਰ ਰਲ ਬਈ ਕੋਈਆਂ ਦੋ ਹੈ ਨਹੀਂ ਉਹ ਰਜਤ ਤਤ ਤਤ ਜਗ ਨਹੀਂ ਰਹੇ ਨੇ ਜਗ ਔਰ ਪਰਮ ਤਤ ਵਾਇਆ ਔਰ ਪਰਮ ਤਤ ਜੇ ਨਾ ਇਕੱਠੇ ਨੇ ਉਹ ਜਗਤ ਹੈ ਸੱਚਾ ਸचेत ਕੋੜਣੀ ਹੈ ਨਾ ਇਹ ਜਗ ਸचेत ਕੀ ਹੋਛੀ ਸੱਚੇ ਗੱਲ ਸਰੀਰ ਜਗ ਹੈ ਜਿਹੜਾ ਪੰਜ ਤਤਾਂ ਵਿੱਚ ਪਰਮ ਤਤ ਹੈ ਅਨਸੈਲੋ ਸੱਚ ਦਾ ਅਰਥ ਸਤਿ ਸਰੂਪ ਹੈ ਜੀਵਾਤਮਾ ਉਹ ਤਤ ਜੀਵਾਤਮਾ ਦਾ ਗਿਆਨ ਤਾਂ ਹੀ ਤਤ ਗਿਆਨ ਕਹਿੰਦੇ ਜੀਵਾਤਮਾ ਦਾ ਤਤ ਹੈ ਜੀਵਾਤਮਾ ਦਾ ਗਿਆਨ ਹੀ ਤਤ ਗਿਆਨ ਦਾ ਤਤ ਦਾ ਗਿਆਨ ਤਤ ਵਸਤੂ ਹੈ ਆਤਮਾ ਉਹਦਾ ਗਿਆਨ ਜਿਹੜਾ ਹੈ ਆਤਮ ਗਿਆਨ ਕਹ ਲੋ ਚਾਹੇ ਤਤ ਗਿਆਨ ਕਹ ਲੋ ਪਰ ਇੱਕ ਬੋਲ ਜਦੋਂ ਇਹ ਜੀਵਤ ਮਰਦਾ ਹੈ ਸਰੀਰ ਕਰਕੇ ਇਹ ਜਗਤ ਜੀਵਤ ਸਰੀਰ ਜਿਉਦਾ ਹੁੰਦਾ ਹੈ ਸਾਹ ਆਉਂਦਾ ਹੁੰਦਾ ਹੈ ਹਾਰਟ ਉਹ ਵਿੱਚ ਚੱਲਦਾ ਹੈ ਕੰਮਕਾਰ ਹੋਵੇ ਕਰਦਾ ਹੈ ਪਰ ਮਨ ਕਰਕੇ ਮਰਿਆ ਹੋਇਆ ਹੁੰਦਾ ਹੈ ਮਨ ਕਰਕੇ ਮਰੇ ਦਾ ਮਤਲਬ ਹੈ ਇਹਦਾ ਮਨ ਕੋਈ ਇੱਛਾ ਹੀ ਨਹੀਂ ਰਹੀ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਇੱਛਾ ਨਹੀਂ 100 ਬਿਸ਼ੇ ਗੁਰਕਾਂ ਵਰਮਾ ਦਾ ਸੋ ਸੇਵਕ ਪਰਮੇਸ਼ਰ ਦੀ ਗੱਤ ਹੈ ਬੀਸ ਬੀ ਸਵੇ ਜਦੋਂ ਪੜਨੇ ਚ ਹੋ ਜਾਂਦਾ ਹੈ। ਫੇਰ ਇਹਨੂੰ ਮਰਿਆ ਆਇਆ ਬੰਦੇ ਨੇ। ਕਾ ਜਾਣਦਾ ਕਦੋਂ ਹੋ ਕੈਸਾ ਮਰਨਾ ਹੋਏ। ਇਹ ਤਾਂ ਸਵਾਲ ਕੀਤਾ ਸੀ ਨਾ। ਮਰਨਾ ਐਸਾ ਹੈ ਕਿ ਮਰ ਕਰਕੇ ਇਹਦੇ ਵਿੱਚ ਕੋਈ ਇੱਛਾ ਰਹੀ ਹੋਈ ਨਹੀਂ। ਮੰਦੀ ਮਰਜੀ ਮਰਜੀ। ਕੋਈ ਮਰਜ਼ੀ ਰੱਖੀ ਹੋਈ ਨਹੀਂ ਜਿਹਦੇ ਘਰ ਦੇ ਵਿੱਚ ਮਰਜ਼ੀ ਨਾ ਹੋਵੇ ਉਹਦੀ ਗਿਣਤੀ ਕਰੋ ਜਾਂ ਨਾ ਕਰੋ ਬਰਕਰੇ ਉਹ ਬੋੜੇ ਦੀ ਬੋੜੀ ਕਿਸੇ ਬਸ ਕਹਿੰਦਾ ਤੁਸੀਂ ਫੈਸਲਾ ਕਰ ਲਓ ਮੈਂ ਤਾਂ ਨਾਲੇ ਆ ਤੁਹਾਡੇ ਦੱਸੋ ਕਿੰਧਰ ਹੋ ਦੋਹੀ ਪਾਸੇ ਕਿਸੇ ਪਾਸੇ ਨਹੀਂ چاہے ਦੋਹੀ ਪਾਸੇ ਕਰ ਲਓ ਉਹਨੂੰ ਜਾਂ ਕਿਸੇ ਪਾਸੇ ਜੇ ਤੁਹਾਡਾ ਇੱਕ ਫੈਸਲਾ ਤੁਹਾਡੀ ਸੰਗਤੀ ਨਾਲ ਫੈਸਲਾ ਹੋ ਗਿਆ ਮੈਂ ਉਧਰ ਹੀ ਉਹ ਕਿਸੇ ਪਾਸੇ ਹੁੰਦਾ ਆ ਉਹ ਵੀ ਕਿਸੇ ਪਾਸੇ ਹੈ ਨਹੀਂ ਜਿਹੜਾ ਕਿਸੇ ਪਾਸੇ ਵੋਟ ਨਹੀਂ ਪਾਉਂਦਾ ਉਹਦੇ ਨਾਲ ਕੋਈ ਵੀ ਤੇ ਨਾਰਾਜ਼ ਨਹੀਂ ਲੱਗਦਾ ਵੀ ਇਹ ਇਕੱਲਾ ਵਿਰੋਧੀ ਪਾਸੇ ਵੋਟ ਪਾਈ ਨਾਰਾਜ਼ ਹੁੰਦਾ ਜਾਂ ਵਿਰੋਧੀ ਪਾਸੇ ਵੋਟ ਪਾਈ ਉਹ ਦੇ ਬਾਅਦ ਹੋ ਗਿਆ ਗਣਤੀ ਦੇ ਬਾਹਰ ਹੋ ਗਿਆ ਨਾ ਇਹ ਗਣਤੀ ਦੇ ਬਾਹਰ ਹੈ ਜੀ ਜੀ ਤੁਮਰੇ ਹੈ ਜਗਤ ਜੀਵਤ ਮਨ ਹੈ ਜਦ ਜੀਵਤ ਮਰਦਾ ਹੈ ਇਹ ਸਰੀਰ ਦੇ ਵਿੱਚ ਹੁੰਦਾ ਹੋਇਆ ਜੀਵਤ ਮਨ ਉਹ ਜਿੰਨਾ ਜਿਹੜਾ ਸਰੀਰ ਜਗਤ ਹੈਗਾ ਸਰੀਰ ਰ ਆਤਮਾ ਦੋਵੇਂ ਹਾਜ਼ਰ ਜੀਵਤ ਮਰਨ ਦਾ ਮਤਲਬ ਇਹ ਵੀ ਜਿਉਦਾ ਵੀ ਹੈ ਭਰਿਆ ਹੋਇਆ ਵੀ ਹੈ ਕਰਕੇ ਭਰਿਆ ਹੈ ਸਰੀਰ ਕਰਕੇ ਜਿਉਦਾ ਲੋਕਾਂ ਬਾਰੇ ਜਿਉਂਦਾ ਪਰ ਦਰਗਾਹ ਦੇ ਭਾਵ ਦੇ ਹੋਇਆ ਲੋਕਾਂ ਬਾਰੇ ਨਹੀਂ ਭਰਿਆ ਲੋਕ ਪਵਲ ਕਦੀ ਮਰਿਆ ਬੁੱਤੀ ਸਰਦਾਰ ਕਦੀ ਮਰਿਆ ਬੁੱਤੀ ਸੰਸਾਰੀ ਲੋਕਾਂ ਵਾਸਤੇ ਜੋਦਾ ਪਤਾਂ ਵਾਸਤੇ ਬਰੇ ਬਸ ਬਰਬ ਗੰਦਗੀ ਗਾਤਾ ਤੁਮ ਗੇੜੀ ਪ੍ਰਮਾਤ ਇਹ ਹੁਣ ਜੀਵਤ ਮਰੇ ਦੀ ਹਾਲਤ ਨੂੰ ਕੋਈ ਜਾਣ ਸਕੂਗਾ ਜਿਹੜਾ ਜੀਵਤ ਮਰਿਆ ਹੋਇਆ ਹੈ ਤਾਂ ਹੀ ਕਹਿੰਦੇ ਮੋਗੇ ਤਾਂ ਸੰਸਾਰ ਸੰਸਾਰ ਨੂੰ ਪਤਾ ਲੱਗੇ ਤਾਂ ਰੋਵੇ ਉਹਦਾ ਲਵਦਾ ਹੀ ਕੁਝ ਨਹੀਂ ਨਖਰੇ ਭੋਲਾ ਲਵਦਾ ਉਹ ਮਰ ਮਰਿਆ ਕਰੇ ਮਕਾਨ ਦੀ ਉਹਦੀ ਕਦੇ ਕੋ ਭੋਗ ਨਹੀਂ ਪਉਦਾ ਉਹ ਵੇੜਾ ਸੀਗਾ ਜੋਤੀ ਜੋ ਸਮਾਉਣ ਦਾ ਨਾਨਕ ਦਾ ਜਦ ਮਰ ਮਰਿਆ ਉਹ ਬਣਾਉ ਜੀ ਬਣਾਉਣ ਉਹ ਤਾਂ ਪਤਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਨੂੰ ਸਰੀਰ ਸਰੀਰ ਦੀ ਜੋਤੀ ਜੋ ਸਮਾਉਣੇ ਉਹ ਸਰੀਰ ਨੂੰ ਮੱਦੀ ਪਾਣੀ ਕੋਈ ਜੋਤੀ ਜੋ ਸਮਾਉ ਦਾ ਵੇੜਾ ਸੀ ਜੀਵਤ ਬਰੇ ਆ ਇਹ ਤੋਂ ਬਾਅਦ ਜਨਮ ਹੋਣਾ ਚਲੋ ਪਹਿਲਾ ਮਨਾਈ ਜਾਂਦੇ ਹੋ ਤੇ ਜੋਤੀ ਜੋ ਪਿਛੋਂ ਮਨਾਈਏ ਸੰਸਾਰੀਆ ਸਭ ਕੁਝ ਕੁਰਬਾਨੀ ਵਾਲਾ ਕੁਝ ਨਹੀਂ ਹੈ ਜਿਹੜੇ ਬਣਾਉਂਦੇ ਨੇ ਇਹ ਮਨੁੱਖਾਂ ਦਾ ਸਭ ਕੁਝ ਹੋਰ pore ਬਣਾਉਣੇ ਦਾ ਕੰਮ ਗੁਰੂਆਂ ਨੇ ਕਿਸੇ ਗੁਰੂ ਦਾ ਨਹੀਂ ਬਣਾਇਆ ਆ ਹੈ ਤਾਂ ਤੁਸੀਂ ਕਿਸੇ ਵੀ ਪੱਖੋਂ ਦੇਖਿਓ ਵੀ ਅਸੀਂ ਸਿੱਖ ਹੈਗੇ ਗੁਰਬਾਣੀ ਦੀ ਕਸਰਤੀ ਤੇ ਪਰਖ ਕੇ ਦੇਖੋ ਸਿੱਖੀ ਫਿਰ ਪਤਾ ਲੱਗੂ ਸਿੱਖੀ ਹੈ ਕਿ ਨਹੀਂ ਗੁਰ ਪ੍ਰਸ਼ਾਦੀ ਜੀਵਤ ਮਰੇ ਹੈ ਗਿਆਨ ਦਾ ਪ੍ਰਸਾਦ ਜਦੋਂ ਮਿਲ ਨਾ ਆ ਵਿੱਚੋਂ ਮਰ ਜਾਣਾ ਫਿਰ ਜੌਦਾ ਵਰਸਾ ਆ ਪਹਿਲਾਂ ਜੌੜੀ ਮਰਨਾ ਨਹੀਂ ਸੰਸਾਰ ਵਿੱਚ ਜੇ ਸੰਸਾਰ ਕੇ ਮੈਨੂੰ ਜੌਦਾ ਹਰ ਕਾ ਸੇਵਕ ਸੁਹਾਰ ਜਿਆ ਬੇਰ ਨ ਜਾਣੋ ਮਰਸਦੇ ਹਾ ਇਹ ਵੀ ਕਿਹਾ ਸੀ ਇਹ ਵੀ ਨਹੀਂ ਅਸੀਂ ਪ੍ਰਵਾਨ ਕੀਤੀ ਕਿਹਾ ਉਹ ਸਭ ਕੁਝ ਿੰਦੂ ਵਾਲਾ ਕਰ ਰਹੇ ਨੇ ਸਿੱਖ ਕੁਝ ਵੀ ਸਿੱਖੀ ਦਾ ਇਹਨਾਂ ਨੂੰ ਗਿਆਨ ਨਹੀਂ ਹੈ ਜਦਨ ਗਿਆਨ ਹੋ ਜੂ ਸਾਰੇ ਗੁਰਪੁਰਬ ਛੱਡ ਜਾਣਗੇ ਬਰੋਲੇ ਸਲਖੜੀ ਘੜੀ ਕਿਹੜੀ ਸੀ ਥਾਈ ਘੜੀ ਉਹ ਗਣੀ ਮਨਾਈ ਉਹ ਬੜਾ ਜਿਹੜਾ ਉਹਦਾ ਚਿੱਤ ਆਇਆ ਹਰਪੜ ਉਹਦਾ ਹੋਰ ਮੁਸਲਖਣੇ ਕਹਿੰਦੇ ਨੇ ਤੁਸੀਂ ਹੋਰੇ ਦਿਨ ਭੇਜਦੇ ਐਸੇ ਕਰਕੇ ਅਸੀਂ ਬਾਣੀ ਨੂੰ ਨਹੀਂ ਮੰਨਦੇ ਸਫੀਦਾ ਇਹ ਗੱਲ ਨਹੀਂ ਮੰਨਣੀ ਅਸੀਂ ਉਹਨਾਂ ਨੂੰ ਜਨਮ ਦਿਨ ਬੁਲਾ ਕੇ ਆਸ਼ੀਰਵਾਦ ਗੁਰਪੁਰਬ ਦਿਹਾੜੇ ਬਣਾ ਕੇ ਰੋਲਾ ਪਾ ਕੇ ਮਤਲਬ ਆ ਜਿਹੜੇ ਨਦਰ ਕੀਰਤਨ ਕਰਕੇ ਇਹ ਕਰਤਾ ਸੀ ਬੜੇ ਸਿੱਖ ਧੋਖਾ ਦੇਉਂਦੇ ਆਪਣੇ ਆਪ ਨੂੰ ਲੋਕਾਂ ਨੂੰ ਲੋਕਾਂ ਨੂੰ ਘੱਟ ਦੇ ਰਹੇ ਨੇ ਆਪਣੇ ਆਪ ਨੂੰ ਜ਼ਿਆਦਾ ਦੇ ਰਹੇ ਨੇ ਲੋਕਾਂ ਨੂੰ ਘੱਟ ਧੋਖਾ ਦੇ ਰਹੇ ਕੋਈ ਵੀ ਆਦਮੀ ਕਿਸੇ ਨੂੰ ਧੋਖਾ ਨਹੀਂ ਦੇ ਸਕਦਾ ਜੇ ਕਿਸੇ ਨੂੰ ਧੋਖਾ ਦਿੰਦਾ ਫਿਰ ਸਭ ਲਈ ਦੇ ਉਹਨਾਂ ਕਿਸੇ ਨੂੰ ਧੋਖਾ ਦਿੰਦਾ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਧੋਖਾ ਦਿੰਦਾ ਕਿ ਅਸੀਂ ਨਹੀਂ ਸਿੱਖੋ ਤਾਂ ਨੁਕਸਾਨ ਸਾਨੂੰ ਹੋਣਾ ਕਿਸੇ ਨੂੰ ਕੋਈ ਨਹੀਂ ਹੋਣਾ। ਉਹ ਇਤੇ ਦਾ ਬਾਕੀ ਦਾ ਬਹੁਤ ਪਤਾ ਨਹੀਂ ਹੈ। ਗੁਰੂ ਸਾਹਿਬਾਂ ਤੇ ਗੁਰੂਆਂ ਨੂੰ ਹੋਇਆ। ਉਹ ਸਾਹਿਬ ਦਾ ਗੁਰਗੱਦੀ ਘਰ ਕੋਲ ਨੂੰ ਨਾਉਣੇ ਆ। ਹੈ। ਉਹ ਜੋਲ ਵਰਗੂਦਾਰੋਂ ਹੈ ਹੀ ਨਹੀਂ। ਕਦੇ একদম ਨਾ ਲੱਗਦੇ ਤੁਸੀਂ ਜਿਹੜੀ ਚੀਜ਼ ਹੈ ਨਹੀਂ। ਝੂੜਨ ਤਰੀਕੇ ਮੰਨਣ ਨੂੰ ਜੀ ਕਰਦਾ ਤੁਹਾਡਾ। ਉਹ ਲੋਗ ਬੜੇ ਜਿੱਤ ਬਣ ਲਏ ਗਏ ਸੱਜਣ ਬਣ ਗਏ ਦੇਖੋ ਜਿੱਤੇ ਝੂਠ ਹੈ ਨਾ ਜਿਹੜਾ ਕੰਮ ਸੌਖਾ ਨੂੰ ਕਰ ਫਟ ਫਟ ਨਹੀਂ ਕਰਦਾ ਕੀ ਬਣਾ ਕੇ ਕੀ ਕਰੂ ਉਹ ਬਣਾ ਸਕਦਾ ਜਿਹੜਾ ਗੁਰਬਾਣੀ ਸਾਡੀ ਨੂੰ ਬੰਦੇ 20 20 ਪਹਿਲਾਂ ਗੁਰਬਾਣੀ 20 ਦੇ ਮੰਨ ਕੇ ਦੇਖੋ ਫਿਰ ਮਨ ਕਹਿੰਦਾ ਬਣਾਉਣਾ ਉਹ ਨਹੀਂ ਕਹਿੰਦਾ ਵਾਜੇ ਛੋਟਾ ਉਹਨੇ ਫਿਰ ਉਹਦੇ ਗੁਰੂ ਪਰ ਇਹ ਤਾਂ ਸਦਾ ਬਸੰਤ ਹੈ ਸਦਾ ਬਸੰਤ ਕਮੇ ਹੋਦੀ ਇੱਕ ਦਿਨ ਬੜਾ ਸਦਾ ਬਸੰਤ ਕਮੇ ਹੁੰਦੀ ਇਸ ਵਿੱਚ ਵੈਮਨ ਨੂੰ ਵੈਸੇ ਸਬਨੜ ਸਦਾ ਬਸੰਤ ਕਮੇ ਹੋਗੀ ਥੋੜੀ ਤਾਂ ਬਸੰਤ ਇਹਦੇ ਨਾਲ ਚੱਲਦੀ ਹੈ ਮਰੂਖਾ ਵਾਲ ਵਸੰਤ ਦਾ ਮਤਲਬ ਫੁੱਲ ਖੜਨੇ ਨਹੀਂ ਹੁੰਦੇ ਬਸੰਤ ਦਾ ਮਤਲਬ ਬਸ ਜਾਣ ਨਾਲ ਹੁੰਦਾ ਰਾਈ ਐਸਾ ਮੌਸਮ ਨਾ ਗਰਮੀ ਨਾ ਸਰਦੀ ਨਾ ਦੁੱਖ ਨਾ ਸੁੱਖ ਨਾ ਦੁੱਖ ਨਾ ਸੁੱਖ ਨਾ ਗਮ ਨਾ ਖੁਸ਼ੀ ਇਹ ਕੋਈ ਇਹ ਤਾਂ ਗੰਰਾਲ ਆਊਗਾ ਹਣ ਨਾਲ ਆ ਹਣ ਨਾਲ ਤੇ ਬਾਬੀ ਖੁਲੀ ਬਣਨੀ ਐ ਬਸਤ ਲਾਹੌਰ ਦਾ ਪਸੰਦ ਤੋਂ ਇੱਥੇ ਬਾਅਦ ਬਸਿਆ ਤੇ ਪਸੰਦ ਆਇਆ ਬਸਤ ਨਹੀਂ ਹੈ ਪਸੰਦ ਹੈ ਲਾਹੌਰ ਬਸਿਆ ਹੋਇਆ ਬਸਤ ਦਾ ਪਰ ਬਸਿਆ ਹੋਇਆ ਜਿਹੜਾ ਬਸਿਆ ਆਇਆ ਉਹਨੂੰ ਪਸੰਦ ਕਰ ਲੈਂਦੇ ਬਸੰਤ ਲਾਹੌਰ ਤੇ ਦੋ ਅੱਥ ਬਣ ਗਏ ਜਦ ਦੁਨੀਆ 'ਚ ਬਸੇ ਹੋਏ ਦਾ ਅਰਥ ਹੋਊਗਾ ਸੱਚਖੰਡ ਦੀ ਬਾਣੀ ਐ ਸੱਚਖੰਡ 'ਚ ਬਸੰਤ ਹੁੰਦੀ ਨਹੀਂ ਨਾ ਫੁੱਲ ਹੁੰਦੇ ਨਾ ਪੇੜ ਹੁੰਦੇ ਨਾ ਬੋਦੇ ਹੁੰਦੇ ਅੱਛਾ ਪਰ ਕੀ ਲਾਉਂਗੇ ਇਹ ਤਾਂ ਧੁਰਗੀ ਬਾਣੀ ਮੰਨ ਕੇ ਅਰਥ ਕਰੋਗੇ ਤਾਂ ਅਰਥ ਹੋਰ ਹੋ ਜਾਣਗੇ ਜੇ ਸੰਸਾਰੀ ਅਰਥ ਕਰੋਗੇ ਤਾਂ ਇੱਥੇ ਦੀ ਬਾਣੀ ਹੋਊ ਜਿੱਥੇ ਸੱਚਖੰਡ ਦੀ ਨਹੀਂ ਰਹਣਾ ਤੇ ਧੁਰਗੀ ਬਾਣੀ ਨਹੀਂ ਰਹਣਾ ਆਪਣੀ ਬਸੰਤ ਵੀ ਇੱਥੇ ਵਾਲੀ ਐ कि एथे दे हाथ करोगे तुर्की वाणी नहीं रहने दे फिर तुर्की न, करता। फिर तुर्की वाणी रहने सरने कोई दिक्कत फिर सरकारा करना दे फिर क्या आएगा सरकडू एथे भी वधूंगा वो भी वधूंगा सब कुछ फिर बकार बदल गए भी वधूंगा वो भर पता यहां ना संसारी अथाना छाछ संसार है ਤਤਰੀ ਰਣ ਦੇ ਵਿੱਚ ਛਾਤਰ ਇਹ ਜਗਤ ਜੀਵਤ ਮਰ ਹੈ ਜਿਹੜੇ ਛਾਸ਼ ਪੀਏ ਸੰਸਾਰ ਦਾ ਕੀਮਤ ਰੁਸੀ ਕਿਉਂ ਕਹੀ ਸੀ ਇਹ ਗੱਲ ਸੰਤੋ ਮੱਖਣ ਖਾਓ ਤੋਂ ਬਾਣੀ ਬਣੀ ਹੋਈ ਹੈ ਉਹ ਮੱਖਣੇ ਖਾਣਾ ਛਾਸ਼ ਨਹੀਂ ਪੀਣੀ ਲਫਜ਼ਾਂ ਨਾਲ ਨਹੀਂ ਜਾਣ ਜਿਹਦੇ ਲਫਜ਼ਾਂ ਵਗਣ ਚਲੇ ਗਏ ਫੇਰ ਤੁਸੀਂ ਸ਼ਾਸ ਸਾਲ ਛੁੱਟ ਜਾਂਦਾ ਹੈ ਤਾਂ ਛੁੱਟ ਗਿਆ ਇਹ ਜਗਤ ਰਮਲ ਸੱਚਖਣ ਦੀ ਖੋਜੋ ਉਹ ਜਿਹੜਾ ਬਸੰਤ ਹੈ ਸਭ ਕੁਝ ਘਰ ਵਿੱਚ ਬਾਹਰ ਨਹੀਂ ਉਹ ਬਾਹਰ ਨਹੀਂ ਬਸੰਤ ਬਸੰਤ ਅੰਦਰ ਹੈ ਜੋ ਇਹਦੇ ਵਿੱਚ ਲਿਖਿਆ ਸਭ ਕੁਝ ਘਰ ਵਿੱਚ ਬਾਹਰ ਨਹੀਂ ਸੋ ਅਸੀਂ ਬਸੰਤ ਬਾਹਰਲੀ ਦੇਖ ਰਹੇ ਤੇ ਘਰ ਦਾ ਹਾਜ਼ਰ ਨਹੀਂ ਹੈ ਏ ਬਸੰਤ ਅੰਦਰ ਨਾਲੜੀ ਜੋੜ ਸਕਦੀ ਤੁਹਾਨੂੰ ਬਾਹਰ ਲਈ ਅੰਦਰ ਹੀ ਬਸੰਤ ਅੰਦਰ ਨਾਲ ਜੋੜਦੀ ਬਾਹਰ ਵੀ ਬਾਹਰ ਰੋਗੀ ਫਿਰ ਜੁੜੀ ਬਸੰਤ ਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦੇ ਸਾਪਰੀ ਸੇ ਹਨ ਪਤਾ ਮੈਨੂੰ ਪਤਾ ਹੈਨਸ ਉਹ ਤਾਂ ਆਪੇ ਪੜ੍ਹ ਲੈਣਗੇ ਜੇ ਪੜ੍ਹਗੇ ਮੈਪ ਤਾਂ ਲੱਗੂ ਇਹ ਪੜ੍ਹ ਕੇ ਜਪਾ ਤਾਂ ਕੋਈ ਬਾਅਦ ਨਹੀਂ ਪਸੰਦ ਕਰਦਾ ਦਾ ਕੀ ਅਰਥ ਜਿਨਨ ਕੇ ਕੰਦ ਦਸ਼ਾਪਰੀ ਦਸਾਵਰੀ ਹੈ ਅੰਦਰ ਹਿਰਦੇ ਤੋਂ ਬਾਹਰ ਨਹੀਂ ਦੇਸ਼ਾ ਹੋਗੇ ਅੰਦਰ ਨੂੰ ਨਹੀਂ ਜਾਂਦੇ ਇਹਨਾਂ ਦੇ ਅੰਦਰ ਹੈ ਨਹੀਂ ਇਹ ਜਗਤ ਜੀਵਤ ਮਰਿਆ ਜਾਂ ਇਸ ਨੂੰ ਸੋਝੀ ਹੋਏ ਜਾਦੇ ਨੂੰ ਸੋਜੀ ਨੂੰ ਟਿਖਾ ਜੰਤ ਕੌਣ ਜੰਤ ਨੂੰ ਪਸ਼ੂ ਕਿਨ ਜੰਤ ਪਸ਼ੂ ਪਸ਼ੂ ਕੌੜੇ ਜਵਾਹੇ ਆਖਰ ਦੀ ਮੰਦਰ ਤੇ ਗੱਲ ਲੈ ਕੇ ਹੋਣੀ ਹੈ ਮੰਦਰ ਦੇ ਹੱਥ ਕਿੱਥੇ ਜਾ ਕੇ ਸਾਨੂੰ ਮਿਲਦੇ ਨੇ ਵਾ ਵੀ ਹੈ ਵਾ ਪਸ਼ੂ ਹੈ ਪਸ਼ੂ ਹੈ ਸਰੀਰ ਨਾਲ ਕੀ ਜਿਹੜਾ ਮਾਇਆ ਨਾਲ ਬਣ ਜਿਹੜਾ ਮਨ ਮਾਇਆ ਦੇ ਹੁੰਦੇ ਹੁੰਦੇ ਜਿਹੜਾ ਮਾਇਆ ਜਪਦਾ ਉਹੀ ਪਸੂ ਹੈ ਪਸੂ ਹੈ ਅਸੰਧ ਦੇ ਵਿੱਚ ਇਹਨੂੰ ਪਸੂ ਕਹਿੰਦੇ ਨੇ ਪਸੂ ਕੋਈ ਸਰੀਰ ਨਾਲ ਨਾ ਤੋਂ ਪੈਦਾ ਪਸੂ ਹੁੰਦੇ ਨੇ ਸਾਰੇ ਸਾਰੇ ਪੈਦਾ ਹੁੰਦਾ ਆ ਗੁਰੇ ਦੀ ਪਸੂ ਵਾਲੀ ਇਹ ਦਾਣਾ ਗੁਰੇ ਪਸੂ ਖਾਂਦੇ ਨਹੀਂ। ਪਸੂ ਜਿਹੜਾ ਕੋਈ ਆਪਾਂ ਖਾਂਦੇ ਗੋਲ ਵੀ ਖਾ ਲੈਂਦੇ ਨੇ ਮਿੱਠਾ ਵੀ ਖਾ ਲੈਂਦੇ ਦੁੱਧ ਬਣਾ ਦੋ ਉਹ ਵੀ ਪੀ ਲੈਂਦੇ ਨੇ ਰੋਟੀ ਸਾਰਾ ਕੁਝ ਖਾ ਲੈਂਦੇ। ਪਸੂ ਉਹ ਠੀਕ ਹੋਰ ਆਪਾਂ ਦੰਦੇ ਨਹੀਂ ਆਪਾਂ ਹੋਰ ਪੱਠੇ ਜਾਂਦੇ ਨੇ ਆਪਾਂ ਦਾ ਖਾਣੇ ਨੂੰ ਕਹਿੰਦੇ ਲੱਗ ਅਸਲ ਕਰ ਕਰ ਖਾਤਾ ਸਕਦੇ ਇਹ ਗਾਇਆ ਮਜਾ ਮੀਟ ਨਹੀਂ ਖਾਂਦੇ ਕੰਤ ਰਹਿ ਲਓ ਦਲਵਾਸੀ ਹੈ ਗਲਤ ਰਹਿ ਗਏ ਤੂੰ ਮੇੜ ਦੇ ਅਰਥ ਗਲੂ ਖਾਣੇ ਦੇ ਨਹੀਂ ਆਹ ਮਨੂ ਖਾਣ ਜਾਂਦੀ ਹੈ ਨਾ ਬਸ ਕਾਲੀ ਵੀਟੇ ਨਹੀਂ ਉਹ ਕਹਿੰਦੇ ਉਹ ਸਾਰੀਆਂ ਦੁੱਧ ਫੇਰ ਖਰਾਬ ਹੋ ਜਾਂਦਾ ਬੁਰੀ ਫੇਰ ਗਈ ਸੀ ਉਹ ਵੀ ਜ਼ਰੂਰੀ ਹੈ ਹਾਂਜੀ ਉਹ ਜ਼ਰੂਰੀ ਹੈ ਵੀ ਤੁਸੀਂ ਉਹਨੂੰ ਖਾਓ ਤੇ ਇਹ ਹੈ ਉਹਨਾਂ ਦਾ ਵਾਹ ਤੇ ਪੱਠੇ ਮੀਟ ਸਾਰੀ ਪੱਠੇ ਨੇ ਵੀ ਜੀਵ ਹੈ ਆ ਹੈ ਪੱਠੇ ਤੇ ਤੇਲਾ ਹੋਵੇ ਉਹ ਵਿੱਚ ਖਾ ਜਾਣ ਮੀਟ ਨਹੀਂ ਹੁੰਦਾ ਪੱਠੇ ਤੇ ਤੇਲਾ ਨਹੀਂ ਹੁੰਦਾ ਪਿਆਰ ਤੇਲਾ ਜੀਵ ਨਹੀਂ ਹੁੰਦਾ ਉਹ ਖਾ ਜਾਣ ਫਿਰ ਲਾडले ਦੀ ਜੀ ਵੀ ਨਾ ਲਾडले ਦੀ ਉਹ ਆਤੋਰੀ ਗੱਲ ਕਰ ਤੇਲਾ ਤੇਲਾ ਹਾਂ ਤੇਲਾ ਹੁੰਦਾ ਤੇਲਾ ਤੇਲਾ ਲੱਗਿਆ ਹੁੰਦਾ ਘਟਾ ਸਰ ਉਹ ਤੇ ਲੱਗਿਆ ਹੁੰਦਾ ਹਾਂ ਫਿਰ ਸਿਖਾ ਗਈਆਂ ਟੁੱਟੀ ਹੈ ਵੈਸੇ ਤਾਂ ਗੁਰਬਾਣੀ ਦੀ ਵਿਆਖਿਆ ਇੱਕ ਦਾਇਰਾ ਹੈ ਬਾਸਤ ਦਾਇਰਾ ਗੁਰਬੰਦ ਸਾਡਾ ਡੈਰੋ ਦਾ ਛੋਟਾ ਫਿੱਟਰਾ ਮੋਰੀ ਕਰਕੇ ਸਾਰਾ ਕਾਸ਼ ਨਹੀਂ ਦੀ ਲੈ ਕਿਸੇ ਕਮਰੇ ਜਰਾ ਮੋਰੀ ਕਰ ਲਈ ਰੱਖੋ ਬਾਹਰ ਦੇਖੀ ਕਿੰਨਾ ਸੋਡੀ ਤੁਗਾ ਮੋਰੀ ਸੀ ਝਿੰਦੋਨੋ ਰੋਕ ਲੂ ਜਿਹੜੇ ਵਾਸ ਨੂੰ ਆ ਸਾਗ ਨੂੰ ਆਟਾ ਡੋਣਦੇ ਕੌਣ ਵਾਸ ਕੌਣ ਸਾਗ ਖਾਵੇ ਉਹ ਮੀਟ ਵੀ ਸਾਗ ਵੀ ਸਾਗ ਵੀ ਮੀਟ ਬਸ ਇਹ ਧਰਮ ਉਹਨਾਂ ਲੋਕਾਂ ਨੇ ਪਾਲਿਆ ਹੋਇਆ ਹੈ ਜਿਹੜੇ ਸੂਰੀ ਦੀ ਵਿਆਹ ਇੱਕ ਕਰਨ ਦਾ ਦਰਸ਼ਨ ਕੀਤੇ ਸੂਰੀ ਨਹੀਂ ਦੇਖਿਆ ਉਹ ਸੂਰਜ ਦੇਖਣ ਵਾਸਤੇ ਤੁਹਾਨੂੰ ਆਕਾਸ਼ ਚ ਉੱਡਣਾ ਪਊਗਾ ਉਹ ਆਪਣੀ ਸੋਚ ਦੇ ਦਾਇਰੇ ਤੋਂ ਬਾਹਰ ਨਿਕਲੇ ਆਪਣੀ ਸੋਚ ਦੇ ਦਾਇਰੇ ਤੋਂ ਵਿਅਕਤੀ ਦੀ ਸੋਚ ਦਾ ਨਰੂੜ ਕੋਰ ਸਨਾਤਨ ਵਾਸਤੇ ਵਿਅਕਤੀ ਦੀ ਸੋਚ ਹੈ ਕਿ ਇਹ ਵਿਅਕਤੀ ਦੀ ਸੋਚ ਹਮਮ ਜਿਹੜੀ ਇੱਕ ਵਿਅਕਤੀ ਦੀ ਸੋਚ ਹੈ ਕਿੱਡੀ ਸੋਚ ਹੋ ਸਕਦੀ ਹੈ ਉਹਨੂੰ ਲੱਗਦਾ ਕਿ ਇਹ ਤਾਂ ਕਿੰਦੂ ਕਰਦੇ ਹੋ ਵਿਅਕਤੀ ਦੀ ਸੋਚ ਸੀਮਤ ਹੁੰਦੀ ਹੈ ਜਿੰਨੀਆਂ ਮਤਾਂ ਨੇ ਵਿਅਕਤੀ ਦੀ ਸੋਚ ਨੇ ਮਨਵੱਤਾਂ ਦੇ ਮਨਵੱਤ ਦਾ ਮਤਲਬ ਹੈ ਵਿਅਕਤੀ ਦੀ ਸੋਚ ਇਕਮਲ ਦੀ ਇੱਕ ਵਿਅਕਤੀ ਦੀ ਸਮਝ ਤੇ ਵੀ ਪਰਿਆ ਹੈ ਸੋਚ ਦੀ ਤਾਂ ਗੱਲ ਛੱਡੋ ਵਿਅਕਤੀ ਦੀ ਸਮਝ ਤੇ ਪਰੇ ਦੀ ਗੱਲ ਹੈ ਤੁਸੀਂ ਵਿਅਕਤੀ ਦੀ ਸੋਚ ਵਿੱਚ ਇਹਨੂੰ ਕਿਵੇਂ ਲਿਆ ਦੋਗੇ ਸੋਚ ਆ ਸਮਝ ਕੀ ਹੁੰਦੀ ਹੈ ਸੋਚ ਹੁੰਦੀ ਹੈ ਜੋ ਕੋਈ ਸਾਡੇ ਭਾਡੇ ਚ ਹੈ ਪਹਿਲੋ ਜੋ ਸਾਡੇ ਬੋਖਲ ਹੈ ਸੋਚ ਉਹ ਜਿਹੜਾ ਹੈ ਸਮਝ ਉਹ ਹੈ ਜਿਹੜੀ ਇਹ ਗੇਨ ਕਰਕੇ ਗੇਨ ਕਰਕੇ ਗੇ ਸਾਰੀ ਉਮਰ ਗੇਨ ਕਰੀ ਜਾਵੇ ਕਿ ਹਜ਼ਾਰ ਜਨਮ ਗੇਰਨ ਕਰ ਲਵੇ ਜਿੰਨੇ ਮਰਜ਼ੀ ਤੱਕ ਕਰ ਲਵੇ ਇਹਦੀ ਕਿਸੇ ਕੋਲ ਉਹ ਸਮਝ ਆਈ ਨਹੀਂ ਫਿਰ ਵੀ ਇਹਦੀ ਸਮਝ ਤੇ ਸਾਰੀ ਦੁਨੀਆ ਦੇ ਗ੍ਰੰਥ ਪੜ ਲਵੇ ਸਾਰੀ ਦੁਨੀਆ ਦੇ ਗ੍ਰੰਥ ਪੜ ਲਵੇ ਇਹ ਜੀ ਸਮਝ ਨਹੀਂ ਆ ਸਮਝ ਸੰਸਾਰ ਦੀ ਸਾਰੀ ਬਾਹਰ ਦੀ ਖੋਜ ਕਰ ਲਵੇ ਇਹ ਜੀ ਸਮਝ ਨਹੀਂ ਆ ਸਮਝ ਕਿਉਂ ਦੀ ਖੋਜ ਹੈ ਉਹ ਬੈਟਰ ਦੀ ਖੋਜ ਹੈ ਜੋ ਸਾਡੀ ਅੱਖ ਨੂੰ ਨਹੀਂ દેਖਦਾ ਜੋ ਕੰਨਾਂ ਨੂੰ ਸੁਣਦਾ ਹੈ ਨਾ ਤੇ ਇਹ ਤਾਂ ਬਾਹਰ ਤਾਂ ਨਹੀਂ ਨਿਯਾਤ ਦਾਦੀ ਇਹ ਤਾਂ ਉਸਾਰੀ ਵਾਲੀ ਗੱਲ ਹੈ ਤੋ ਇਸ ਕਰਕੇ ਮਨਬુદ્ધੀ ਤੋਂ ਪਰੇ ਕਰਦੇ ਕਿ ਪਰੇ ਸੰਸਾਰੀ ਬੁੱਧੀ ਤੋਂ ਪਰੇ ਦੀ ਗੱਲ ਕਰ ਉਹ ਸ਼ਬਦ ਜੀ ਸਾਰ ਇੱਕ ਗੱਲ ਕਹੀ ਆਈ ਉਹਦੇ ਚ ਪਹਿਲੇ ਪਾਸ਼ਾਲੇ ਸ਼ਬਦ ਇਹ ਕਹਿੰਦਾ ਕਿ ਘਾਹ ਖਾਣ ਦੇ ਨਾਮ 'ਤੇ ਨमाज ਖਵਾ ਲੈ ਉਹਨਾਂ ਤੇ ਘਾਹ ਦੇ ਮਾਲ ਸਾਡੇ ਨਾਲ ਕਿ ਘਾਹ ਦੀ ਜਿਹੜੀ ਇਹਨਾਂ ਦੀ ਜਿਹੜੀ ਭਾਸ਼ਾ ਦੀ ਗੱਲ ਕਰੀਏ ਉਹਨਾਂ ਦੀ ਭਾਸ਼ਾ ਗੱਲ ਕਰੀਏ ਜਿਹੜੇ ਪਰਮੇਸ਼ਰ ਐਸੇ ਉਹ ਖੇਡ ਹੈ ਬਿੰਦ ਨ ਸਮਰੱਥ ਹੈ ਜੇ ਕਹਿੰਦਾ ਮੈਂ ਸਾਰੀ ਉਮਰ ਬਾਦ ਨਹੀਂ ਖਾਣਾ ਕਿ ਅਗਲੇ ਦਿਨ ਤੈਨੂੰ ਸੱਪ ਦਾ ਖਾ ਕੇ ਦਾ ਜਨਮ ਅਗਲੀ ਵਾਰ ਤੂੰ ਆਪ ਜਾਵਰੇ ਨਾਲ ਬਾਹਰ ਤੈਨੂੰ ਖਾਗਰ ਖਾ ਉਹ ਇਹ ਜਿਹੜੀ ਵਾਸਾ ਦਾ ਰਿਹਾ ਤੂੰ ਬੋਲੀ ਬਣੀ ਹੈ ਖਾ ਢੰਡਾ ਹੈ ਢੰਡਾ ਹੈ ਜੇ ਇਹ ਹੰਕਾਰ ਕਰੇ ਨਾ ਕੋਈ ਮੈਂ ਬਾਸ ਨਹੀਂ ਖਾਦਾ ਇਸ ਸੈਂਸ ਚ ਹੋਊਗੀ ਗੱਲ ਹਾਂ ਨਹੀਂ ਪੁੱਤੋ ਆਪਣੇ ਨੂੰ ਸਮਝਾ ਮੈਂ ਜ਼ਿੰਦਗੀ ਤੇਰਾ ਇਹ ਹੰਕਾਰ ਛੋੜ ਦੂਗਾ ਅਗਲੇ ਜੂਨ ਤੈਨੂੰ ਪਾ ਦੂਗਾ ਮੱਛੀ ਤੂੰ ਭੱਜਿਆ ਮੈਂ ਬਾਸ ਖਾਦਾ ਤੇਰੇ ਹੋਰ ਬਜੇ ਉੱਪਰ ਨੂੰ ਤੂੰ ਖਾਦਾ ਤੇਰੇ ਬਾਸਾ ਤੇ ਆ ਜਾਨੀ ਸੇਵਰ ਰੁਕਾਰ ਤੋੜਿਆ ਉਹ ਵਾਲੇ ਲੱਭਦਾ ਵਰਤਿਆ ਤੇ ਖਵਲੇ ਖਵਲੇ ਸੁਬਾਨ ਅੱਲਾ ਹੈ ਫਿਰ ਕੀ ਕਰੇਗਾ ਉਹਦੇ ਪਾਣੀ ਤੇ ਦੁੱਧ ਵੱਸ ਸਕਦਾ ਜਿਹੜਾ ਪੁੱਛੀਦਾ ਬੰਦ ਕਰਕੇ ਨਿਗਲਾਂਗੇ ਦਿਨੇ ਉਹ ਜਿੱਥੇ ਕਸਤੂਰਬਾ ਗੰਦੀ ਹੈ ਉਹ ਵੀ ਬਾਹਰੋਂ ਘਰ ਵਾਲੀ ਕਸਤੂਰਬਾ ਵਾਕਵਾ ਗੰਦੀ ਆਪਣੀ ਉਹਦੇ ਵਿੱਚ ਲਿਖਿਆ ਜੀ ਬਿਨੈ ਦੇ ਜਵਾਹਰ ਨਾਲ ਹੀ ਪੜਿਆ ਸੀ ਕਿ ਉਹਨੂੰ ਗਾਉ ਡਾਕਟਰ ਨੇ ਬਹੁਤ ਕਮਜ਼ੋਰ ਹੈ ਇਹਦਾ ਆਪਰੇਸ਼ਨ ਕਰਨਾ ਉਹਨੂੰ ਬੇਹੋਸ਼ਤਾ ਕਰ ਨਹੀਂ ਸਕਦੇ ਸੀ ਕੰਨੀ ਕੋਈ ਸੀ ਕੁਝ ਕੀ ਉਹ ਜਦੋਂ ਆਪਰੇਸ਼ਨ ਹੋ ਗਿਆ ਤਾਂ ਉਹ ਕਹਿੰਦਾ ਵੀ ਇਹਨੂੰ ਮਲਸ ਧਰੀ ਵਗੈਰਾ ਦੇਣਾ ਚਾਹੀਦਾ ਉਹ ਤਾਂ ਸੀ ਉਹ ਕਹਿੰਦੇ ਬਹਿਰ ਜੂ ਵੀ ਬਹੁਤ ਹਾਂ ਦੋਬਾਰਾ ਗੱਲ ਕਰੀਏ ਕੋਈ ਗੱਲ ਨਹੀਂ ਕੀ ਸੀ ਬਾਈਬਲ ਪਹਿਲਾਂ ਕੀਤਾ ਹੈ ਹਾਂ ਉਹ ਕਹਿੰਦਾ ਵੀ ਤੇ ਰੰਨੀ ਮੰਦਾ ਮੰਨਣਾ ਹਾਂ ਬਈ ਜਦੋਂ ਕਿਸੇ ਦਾ ਮਨ ਨਾ ਮੰਦਾ ਹੋਵੇ ਉਹ ਲੋਖਾਣ ਦੇ ਨਾਲ ਉਹ ਤਰਸ ਨਹੀਂ ਹੋ ਸਕਦਾ ਉਹ ਦੱਸ ਰਹੀ ਤੇ ਅਸਰ ਨਹੀਂ ਕਰਦਾ ਹੋਰ ਗਲਤ ਅਸਰ ਕਰੂਗਾ ਬਤਾ ਬਰੋ ਜਿਹੜਾ ਹੈ ਕਾ ਹੋਰ ਬੋਲੋ ਬਲ ਗੁਰੂ ਗਰਿਆਦੂਰ ਜਾਂਦਾ ਲੋਕਾਂ ਦੀ ਸਿਆਣਾ ਸੀਗਾ ਆਪ ਵੀ ਸਾਰੇ ਉਹ ਉਹ ਤਾਂ ਕਹਿੰਦਾ ਕਿ ਬਾਰੇ ਜਿਹੜਾ ਉਹਨੇ ਬੱਕਰਾ ਖਾ ਲਿਆ ਸੀ ਆਪੇ ਦੱਸਦਾ ਹੋ ਸਮਝੇ ਪਰ ਫਿਰ ਛੱਡਤਾ ਸੀ ਜਦੋਂ ਉਹ ਗੱਲਾਂ ਲੱਗ ਗਈ ਉਹ ਕਹਿੰਦਾ ਫਿਰ ਉਹਨੇ ਕਹਿੰਦਾ ਛੋਲਿਆਂ ਦੀ ਜਿਹੜੀ ਤਰੀ ਹੁੰਦੀ ਹੈ ਇਹ ਜਿਹਦਾ ਵਾਹਣਾ ਵੀ ਕਿਸੇ ਤਰ੍ਹਾਂ ਜਿਹੜੇ ਪੜਿਆ ਵੀ ਇਹ ਹੋਏ ਜਾਈ ਕੰਮ ਕਰ ਜਾਂਦਾ ਕਿੰਨਾ ਫਿਰ ਉਹ ਦੇਰ ਲੱਗਿਆ ਸੀ ਆਟਰਨੇਟ ਦਾ ਲੱਭਿਆ ਹੁਣ ਉਹਨੂੰ ਕੌਣ ਦੱਸਿਆ ਵੀ ਜਿਹੜੇ ਛੋਲੇ ਸੀ ਕਿੰਨੇ ਜੀ ਬਾਰੇ ਤੇ ਇਹ ਕੌਣ ਦੱਸਿਆ ਉਹ ਆਪ ਉੱਥੇ ਤਾਂ ਇੱਕ ਹਲਤ ਮਾਜੀ ਕੀਤੀ ੱਲੇ ਬੱਕਰ ਇੱਕ ਨੇ ਇੱਕ ਤਾਂ ਜਾਉਂ ਕਿਲੋ ਚੋ ਤੇ ਛੋਲੇ ਇੱਕ ਚ ਹੀ ਸੈਂਕੜੇ ਖਾਵੇ ਜੀ ਇਹਨੂੰ ਕੌਣ ਸਮਝਾਵੇ ਇਹ ਗੱਲ ਜੇਤੇ ਦਾਣੇ ਅੰਨ ਕੇ ਜੀਵੈ ਨਾ ਕੋਈ ਆ ਨਹੀਂ ਸੀ ਬੜਿਆ ਉਹ ਨੂੰ ਜਿਆਦਾ ਜੀਵ ਖਾ ਕੇ ਵਾਰ ਕੇ ਚੰਗਾ ਇਸ ਸੰਦਰਭ ਤੋਂ ਦੇਖੋ ਜਿਹੜਾ ਲਫ ਜਾਨਾ ਰਿਹਾ ਉਹ ਸੰਸਾਰੀ ਭਾਸ਼ਾ ਕਰਕੇ ਜਿਹਤੇ ਦਾਣੇ ਅੰਨ ਕੇ ਅੰਨ ਹੈ ਜਿਹੜਾ ਤੇ ਅੰਨ ਦਾ ਹੈਗਾ ਕਿ ਅੰਨ ਮਲ ਗਿਆ ਵੀ ਮੀਟ ਨਾਲੋਂ ਫਰਕ ਹੁੰਦਾ ਜੀ ਫਿਰ ਮਾਸ ਨਾਲੋਂ ਹੋਣਾ ਜੀ ਅੰਨ ਅੰਨ ਕਿਹਾ ਹਲੇ ਹਲੇ ਸਵਾਲ ਇਹ ਹੈਗਾ ਜਿਹਨੂੰ ਅਸੀਂ ਅੰਨ ਆਪਣੀ ਭਾਸ਼ਾ 'ਚ ਕਹਿੰਨੇ ਹਾਂ ਅੰਗਰੇਜ਼ੀ ਦੇ ਵਿੱਚ ਲਿਖਣਾ ਜੇ ਇੱਥੇ ਕੱਲ ਨੂੰ ਰੈਜੀ ਲਿਖ ਲੋਗੇ ਅੰਨ ਥੋੜੀ ਲਿਖਣਾ ਠੀਕ ਕੀ ਲਿਖਾਂਗੇ ਜਿਹੜਾ ਉਹਨਾਂ ਦੀ ਭਾਸ਼ਾ ਦਾ ਲੱਗਦਾ ਸਾਡੀ ਭਾਸ਼ਾ ਦਾ ਲਫ਼ਜ਼ ਅਨ ਹੈ ਇਹੀ ਵਰਤਣਾ ਪਿਆ ਲੋਕਾਂ ਨੂੰ ਦੱਸਣ ਵਾਸਤੇ ਜੇ ਨਵਾਂ ਲਫ਼ਜ਼ ਕਾੜ ਲੈਂਦੇ ਫਿਰ ਦੱਸੋ ਬਈ ਕਾਹਦੀ ਖਤਰੜ ਹੈ ਬੋਲਦੇ ਸੀ ਅਸੀਂ ਕੋਣ ਵੀ ਬੋਲਦੇ ਆ ਸਾਡੇ ਬੋਲਦੇ ਹਾਂ ਅਸੀਂ ਹੁਣ ਵੀ ਬੋਲਦੇ ਕੋੜੇ ਸਮਝਾਉਂਦੇ ਵੀ ਜਿਹੜੇ ਆਂਦੇ ਦਾੜੀ ਜਿਹਨੂੰ ਤੁਸੀਂ ਕਹਿੰਦੇ ਹੋ ਦੱਸੋ ਇਹਦੇ ਵਿੱਚ ਜੀ ਦੇ ਬਿਨਾਂ ਕਿਹੜਾ ਦਰਦ ਕਿਉਂ ਜੇ ਪਨਾ ਕਰੇ ਜੀ ਹੈ ਤਾਂ ਹੀ ਰੁਕਦੇ ਨੇ ਵਾਰਡੋ ਫੇਰ ਹੀ ਉਹਦੇ ਠੰਡੇ ਪਾਣੀ ਚ ਪੀਓ ਨੇ ਗਰਮ ਪਾਣੀ ਚ ਪੀਓ ਫੇਰ ਹੀ ਉਹਦੇ ਐਨੇ ਗਰਮ ਪਾਣੀ ਚ ਰੱਖੋ ਜੀ ਕਿ ਹੱਥ ਪਤਾ ਲੱਗੇ ਆਪਣੇ ਨੂੰ ਗਰਮ ਹੋਣਾ ਪਾਣੀ ਕਰਨ ਲੱਗੇ ਇਹਦੇ ਪਾਣੀ ਦੇ ਵਿੱਚ ਗਰਮ ਨਾਲੇ ਨੂੰ ਰੱਖੋ ਤਾਂ ਮੈਨੂੰ ਮਿਲਦਾ ਫੇਰ ਨਹੀਂ ਉਹਦਾ ਜੇ ਫੇਰ ਵੀ ਨਹੀਂ ਉਹ ਇਹ ਗਰਮ ਪਾਣੀ ਨੇ ਗਰਮ ਪਾਣੀ ਪਾ ਦੋ ਉਹਦੇ ਜਿਹੜੇ ਤੇ ਵਰਜੂਗਾ ਮਾਦਾ ਇਹ ਤੋਂ ਇਹ ਨਦਲੂ ਬਹੁਤ ਰਾਜਕੋੰਦਾ ਨੂੰ ਜਦੋਂ ਜਦ ਪਹਿਲਾਂ ਹੁੰਦਾ ਉਹਨੇ ਕਰਮਣਾ ਲਈ ਪਾਣੀ ਗਰਮ ਹੋ ਜਾਏ ਫੋੜਾ ਫੋੜਦੇ ਵਰਜਦੀ ਹੈ ਫੋੜਦੇ ਜੀ ਜੀ ਤੋਂ ਆਪਣਾ ਕਰ ਪਾਣੀ ਆਉਤੇ ਉਹਦੇ ਸਾਰੇ ਵਰਜਦੇ ਆਪਾਂ ਤਾਂ ਫੁੱਟਦੀ ਹੀ ਨਹੀਂ ਜਿਹੜਾ ਰਾਜਕੋੰਦਾ ਬਹੁਤ ਬਿਜ ਜਿੰਨੇ ਦਾਣੇ ਦੇ ਅੰਦਰ ਤੁਹਾਡੇ ਸਭ ਤੋਂ ਜੀਵ ਸਾਰੇ ਜੀਵ ਜਿੱਥੇ ਜੀਵ ਹੈ ਉਹਦਾ ਜਿਹੜਾ ਸਰੀਰ ਹੈ ਬਾਹਾਂ ਉਹ ਮਾਸ ਹੈ ਉਹ ਮਾਸ ਹੈ ਬਸ ਦਾਣੇ ਦੇ ਵਿੱਚ ਜਿਹੜਾ ਆਤਮਾ ਉਹਦਾ ਸਰੀਰ ਆ ਛੋਲੇ ਦੀ ਜਿਹੜਾ ਦਾਣੇ ਦੋਸੇ ਕਰਦੇ ਨੇ ਦਾਣੇ ਉਹਦਾ ਮਾਸ ਹੈ ਉਹ ਮਾਸ ਹੈ ਜਦੋਂ ਉਹ ਗਿਰੂ ਗਿਰੂ ਗਿਰੂ ਗਿਰੇਗਾ ਬਚਿਆ ਉਹ ਜਗਤ ਜਗਤ ਜਗਤ ਮਾਇਆ ਹੈ ਉਹ ਮਾਇਆ ਹੀ ਹੈ ਮਾਇਆ ਤੁਸੀਂ ਹੁਣ ਮਾਇਆ ਜਰੀ ਹੈ ਰਖਾ ਸਕਦੀ ਹੈ ਨਾ ਆਤਮਾ ਨੂੰ ਆਤਮਾ ਪੈਦਾ ਕਰ ਸਕਦੀ ਹੈ ਨਾ ਆਤਮਾ ਨੂੰ ਆਤਮਾ ਦਵਾ ਸਕਦੀ ਹੈ ਨਾ ਆਤਮਾ ਨੂੰ ਆਤਮਾ ਹਲੂ ਕਰ ਸਕਦੀ ਹੈ ਇਹਦਾ ਹੋਈ ਨਹੀਂ ਨਾ ਉੱਥੇ ਮਾਸ ਨਹੀਂ ਮਾਸ ਖਾਂਦਾ ਸਰੀਰ ਨੇ ਮਾਸ ਨਹੀਂ ਮਾਸ ਖਾਂਦਾ ਮਾਸ ਨਹੀਂ ਜਾ ਜੀ ਆਗਾ ਹਰ ਜੀ ਇਹ ਦਸੀ ਹੈ ਇੱਕ ਵਿਆਪਕ ਜਿਹੜੀ ਲੀਲੂ ਮਤਨ ਸਰਬ ਵਿਆਪਕ ਦਾ ਸਰਬ ਵਿਆਪਕ ਦੀਵਤ ਹੈ ਇਹ है ਖਰੀ ਬੁੱਧੀ ਬਹੁਤ ਅਕੰਤ ਸੀਮਿਤ ਹੁੰਦੀ ਹੈ ਇਸ ਕਰਕੇ ਮਨਵਾਤ ਅਤਿਆੰਤ ਸੀਮਿਤ ਗੱਲ ਹੁੰਦੀ ਹੈ सारी ਵਾਰਡ ਨੂੰ ਵੀ ਨਹੀਂ ਜਾਣਦਾ ਜਿਹੜੇ आदमी ਵਾਰਡ ਫਿਰਿਆਉਂਦੇ ਨੇ ਉਹ ਆਪਣੀ ਬਤਰੂਨੀ ਮੰਦੇ ਸਾਡੇ ਸਿੱਖੀ ਤੋਂ ਵਾਕੀ ਕਿਉਂ ਹੋ ਗਏ ਜਿਹੜੇ ਬਾਹਰ ਕਿਤੇ ਗਏ ਨੇ ਉਹਨਾਂ ਦੇ ਬਾਹਰ ਦੇ ਨੇ ਉਹ ਤੁਹਾਡੇ ਕਾਬੂ ਵੀ ਨਹੀਂ ਹੁੰਦੇ ਉਹ ਉਹਨੇ ਹੋਰ ਬਤਾਂ ਪਾੜੀ ਹੋਰ ਦੇਦੇ ਉਹ ਪਖੰਡ ਬਾਅਦ ਵਿੱਚ ਯਾਨਾ ਨੈੜਾ ਬਣਉਂਦਾ ਨਾ ਹੋਤਰ ਹੁੰਦਾ ਹੁੰਦਾ। ਫਿਰ ਇਹ ਤਕੜੀ ਬੁੱਧੀ ਨਾਲ ਕਾਬੂ ਆਉਂਦੇ। ਉਹ ਬੁੱਧੀ ਜਿਹੜੀ ਸਾਇੰਸ ਤੋਂ ਉੱਪਰ ਹੈ। ਡਾਕਟਰ ਤੋਂ ਉੱਪਰ ਹੈ। ਰਾਖਣਾ ਤੋਂ ਉੱਪਰ ਹੈ। ਰੱਬ ਤੋਂ ਉੱਪਰ ਹੈ। ਇਹਦੀ ਸੰਸਾਰਕ ਹੈ ਨਹੀਂ ਨਾ ਗਿਆਲ। ਉਹਦੇ ਨਾਲ ਕਾਬੂ ਹੋਣੀ ਨਹੀਂ ਆਈ ਨਹੀਂ ਸਕਦਾ। ਪੁੱਲੀ ਕਰਕੇ ਤੋ। ਇਹਦੇ ਨੂੰ। ਇਹਨੇ ਸਭ ਕੁਝ ਬਣਾਇਆ। ਕਦਰੋ ਇਹ ਗਿਆਨ ਹੈ ਨਹੀਂ ਸੰਸਾਰ ਇਹ ਸੰਸਾਰ ਦੀ ਗਿਆਨ ਨਹੀਂ ਹੁੰਦਾ ਹੈ ਪਾਣੀ ਨਵਾਂ ਹੈ ਛਾਹ ਹਿੰਦ ਮਿੱਤਰ ਇਹ ਨਵਾਂ ਹੁੰਦਾ ਯਾਦ ਹੋ ਹੈ ਇਹ ਨਵਾਂ ਹੀ ਹੁੰਦਾ ਅੱਜ ਦੀ ਢੇੜਤ ਵੀ ਪਾਵੇ ਨਵਈ ਤਰੀਕੇ ਨਵਈ ਹੋ ਰਹੇ इट डिस्कवर हो रहा है डिस्कवर मतलब चीज है सी कवर के ठन सी हो छुपी हुई सी डिस्कवर हो, हो, हो रहा है इसका के सारा संसार का ज्ञान डिस्कवर हो रहा है खोजें डिस्कवरी हो खोज है ना खोज हो तो बहुत डिस्कवरी हो जाती है और देसी वाला उसका डिस्कवरी ज्ञान साडे को प्यार ਲੇਕਰ ਪਾਸ਼ਾ ਦਾ ਕਬਰ ਚੜਿਆ ਹੋਇਆ ਉੱਤੇ ਦੁੱਧ ਜਿ ਕਿਉ ਹੈ ਇਹਕਰੋ ਪਾਣੀ ਦਾ ਆ ਦਾ ਕਬਰ ਚੜਿਆ ਹੋਇਆ ਹੈ ਉਹਨੇ ਲੱਸੀ ਇਹਨੋਂ ਦਾ ਕਬਰ ਚੜਿਆ ਹੋਇਆ ਉੱਤੇ ਉਹ ਨਹੀਂ ਨਾ ਕਿਉਂਦੀ ਨਾ ਮੱਖਣ ਹੁੰਦਾ ਹੈ ਵਿੱਚ ਦਿਖਦਾ ਨਹੀਂ ਮੱਖਣ ਹੁੰਦਾ ਹੈ ਵੀ ਨਹੀਂ ਇਹਦੇ ਤੰਤ ਹੁੰਦਾ ਹੈ ਵੀ ਨਹੀਂ ਨਾ ਜੀ ਲੱਸੀ ਬਹਤੀ ਹੈ ਭਾਸ਼ਾ ਦਾ ਇਹ ਫੇਰ ਹੋ ਕੁਛ ਇਹ ਜਗਤ ਜੀਵਤ ਮਰ ਹੈ ਜਾਂ ਇਸ ਨੂੰ ਸੋਝੀ ਹੋਏ ਕੋ ਜੀਵਤ ਮਰ ਹੈ ਜਗਤ ਗੁੱਡ ਕਹਿੰਦੀ ਹੈ ਸੰਸਾਰੀ ਭਾਸ਼ਾ ਸੰਸਾਰੀ ਕੋਈ ਗੱਲ ਬੱਦੀ ਜੇ ਸੰਸਾਰੀ ਬੱਤੇ ਬੱਦੀਆਂ ਹੋਣਗੀਆਂ ਤਾਂ ਇਹਨੂੰ ਅਟਾ ਲੰਗੇ ਜੀ ਸੰਸਾਰੀ ਮਤ ਸੀ ਗੁਰੂ ਅਮਰਦਾਸ ਕੋਲ ਫਿਰ ਵੀ ਪੁੱਛ ਰਹੇ ਨੇ ਕਿ ਐਸਾ ਮਨਣਾ ਜੇ ਸਭ ਨੂੰ ਇਹ ਕੈਸਾ ਮਨਣਾ ਜੇ ਉਹ ਲਗਦੇ ਕੈਸਾ ਮਨਣਾ ਬੰਦੇ ਸੰਸਾਰ ਦੇ ਮਰਣਾ ਹੈ ਨਹੀਂ ਸੰਸਾਰੇ ਗ੍ਰੰਥਾਜੋ ਦਾ ਜੇਕਰ ਹੈ ਨਹੀਂਗਾ ਸਿਰਫ ਪੈਸੇ ਕਰ ਚੇ ਕਰ ਗੱਲੋ ਜਾਏ ਛੁੜੀਏ ਛੁੜੀਏ ਕਰੀ ਜਾਂ ਪੈਸੇ ਦੀ ਗੱਲ ਛੁੜੀਏ ਛੁੜੀਏ ਰਾਮ ਦੀ ਵੀ ਗੱਲ ਉਹ ਕਰਦੇ ਪਰ ਨਾ ਮੰਨਦੇ ਕਿਨੂੰ ਉਹ ਵੀ ਤੇ ਛੁੜੇ ਜਾਪੀ ਗੱਲ ਕਰਦੇ ਪਰ ਹੈ ਉਹਨਾਂ ਦਾ ਕੀ ਤabbe ਸੋਨੀਆਂ ਚੜਈਆਂ ਗੱਲਾਂ ਨੇ ਡੁਪਲੀਕੇਟ ਸਭ ਜਾਪ ਤਾਪ ਸਭ ਡੁਪਲੀਕੇਟ ਹੈ ਤਾਂ ਵੀ ਜਵਦੇ ਸਤਾਇਆ ਕਰਨੇ ਟੈਕਨੋਲੋਜੀ ਵਰਮਤਾਲੇ ਕੋਈ ਵੀ ਨਹੀਂ ਸਦਾਈਆਂ ਜੀ ਰੋਤਾ ਤਰੂ ਕਰਦੇ ਤਾਂ ਹਟਾਉਣ ਵਾਲੀ ਚੀਜ਼ ਹੈ ਗੁਰਵਾਨੀ ਨਹੀਂ ਬੰਦੇ ਗੁਰਵਾਨੀ ਨਾ ਵਾਲੀ ਚੀਜ਼ ਬੰਦੀ ਨਾਮ ਕਿ ਤਾਰੇ ਸਰ ਨੂੰ ਨਾਮ ਕਿ ਤਾਰੇ ਸਰ ਨੂੰ ਜਾਣਤਾ ਤਰੂਗੇ ਕਿ ਤਾਰੇ ਹੈ ਤਰੂਦਾ ਵੀ ਨਹੀਂ ਵਿਸ਼ਾ ਹੈ ਇਹ ਵਸਾਇਨ ਇੱਕ ਵਿਸ਼ਾ ਹੈ। ਕੁ ਅੱਗੇ ਜਾਓ ਤਾਂ ਕਈ ਪਾੜ ਹੋ ਜਾਂਦੇ ਨੇ। ਧਾਰਮਿਕ ਵਿਸ਼ਾ ਹੈ। ਕੋਈ ਖਾਨਦਾਨ ਦਾ ਹੈ। ਕੋਈ ਗਰੇ ਦਾ ਬਹਾਰ ਹੈ। ਕੋਈ ਚੌੜੀ ਦਾ ਬਹਾਰ ਹੈ। ਵਾਹਲਾ ਕਿੰਨੇ ਵਰਤਦੇ ਨੇ। ਧਾਰਮਿਕ ਵਿਸ਼ਾ। ਧਾਰਮਿਕ ਵਿਸ਼ਾ ਹੈ। ਇਹਾਂ ਦੋਸਤ ਜੋ ਕਾਰਨ ਲੋਕ ਉਹਦਾ ਗਿਆਨ ਕਰਾ ਤੱਕ ਵਿਸ਼ਾ ਪੜਾਈ ਦਾ ਠੀਕ ਪੜਾਈ ਦੇ ਵਿਸ਼ੇ ਨੂੰ ਤੁਹਾਨੂੰ ਦੱਸ ਦੇਣੇ ਬੋਲੀਗੇ ਸੱਚ ਤਾਂ ਸੱਚ ਬੋਲਣ ਤਾਂ ਬਸ ਤਾਂ ਨੂੰ ਤਾਂ ਝੂਠ ਬੋਲੇ ਸਾਰੇ ਉਹ ਧਰਮੀ ਨਹੀਂ ਹੈ ਤਨ ਕਥੇ ਸਾਰੇ ਝੂਠ ਬੋਲ ਜੋ ਰੋਬਰ ਰੋਬਰ ਜਾਨੇ ਤਾਂ ਲੋਕਾਂ ਨੇ ਤਾਂ ਪਰ ਲੋਕ ਇਹਨੇ ਕੰਮ ਫਰਪਖਾਣੇ ਚਿੱਤੇ ਝੂਟੋ ਲਿਆ ਉਹ ਤਾਂ ਨਹੀਂ ਉਹ ਤਾਂ ਕਿੱਥੇ ਸੱਚ ਨਾਲ ਜੋੜਦਾ ਤਾਂ ਧਰਮ ਹਮ ਇਹ ਝੂਠਾ ਧਰਮ ਨਹੀਂ ਉਹ ਅਤਾਰਮ ਅਤਾਰਮ ਤਾਂ ਤਾਂ ਬਣੇ ਧਰਮ ਦਾ ਨਿਰਣਾ ਕਰ ਲਈਏ ਬਾਣੀ ਅਸਲ ਚ ਇੰਨੀਆਂ ਬਤਾਂ ਨੇ ਸੱਚ ਕੀ ਹੈ ਲੋਕਾਂ ਸੱਚੀ ਗੱਤ ਗੜੀ ਹੈ ਜੇ ਉਹ ਝੂਠੀ ਹੈ ਤਾਂ ਕਿਉਂ ਝੂਠੀ ਹੈ ਝੂਠ ਕਿੱਥੇ ਹੈ ਬਸਤੀ ਕਿੱਥੇ ਹੈ ਰਾਡ ਬਿੰਡ ਰੇਕ ਕਰਕੇ ਦੱਸਦੀ ਹੈ ਐਵੇਂ ਨਹੀਂ ਕਹਤਾ ਵੀ ਝੂਠਾ ਉਹ ਵੀ ਝੂਠਾ ਉਹ ਵੀ ਝੂਠਾ ਹੈ ਕਿਉਂ ਝੂਠਾ ਹੈ ਕਿੱਥੋਂ ਉਹ ਜਿਹੜਾ ਉਲੀ ਹੈ ਬਟਰੀਆ ਜਿਹੜੀ ਜੇ ਉਹਨੂੰ ਉਹਦਾ ਜਿਹੜਾ ਲਾਭ ਲੱਗਦਾ ਉਹ ਤੂੰ ਖੜ ਰਕੇ ਹੱਤ ਮੰਬਲੀ ਉਹਦਾ ਇੱਕ ਤੱਕੇ ਨਾ ਸਮਝਣ ਵਾਲੀ ਹੈ ਸੰਪਰਦਾਇ ਹੈ ਉਹਦਾ ਇੱਕ ਆਪਣੀ ਸੋਸਾਇਟੀ ਹੈ ਸੋਸਾਇਟੀ ਨੂੰ ਕਦੇ ਛੱਡੇ ਮਜਬੂਰੀ ਹੈ ਸਹੀ ਟੱਡੇ ਬਣੋਗੇ ਯੋ ਸੋਸਾਇਟੀ ਆਡ ਹੁੰਦੀ ਐ ਛੋਲੇ ਕੁੜੀਆਂ ਬਹਿ ਹੁੰਦੇ ਸਵਾਲ ਖੜੇ ਹੋ ਜਾਂਦੇ ਅੰਦਰ ਜੈਸੇ ਖਬੂਰੂ ਰੜਾ ਲੈਣਾ ਛੋਲੇ ਕੁੜੀਆਂ ਬਹਿ ਹੁੰਦਾ ਪਰ ਲਾੜਾ ਖੜਾ ਆਇਆ ਦੇ ਜਿਹੜੇ ਜਾਂਦੇ ਹੋਏ ਸੀ ਉਹ ਤਾਂ ਨਿਕਰਾਦਾ ਲਿਖਿਆ ਹੁੰਦਾ ਵੀ ਲਾੜਾ ਸਭੀ ਜਾਇਦਾ ਪੈ ਗਿਆ ਪ੍ਰੋਬਲਮ ਹੋ ਗਈ ਇਹ ਜਗਤ ਜੀਵਤ ਮਰਿਆ ਜਾਂ ਇਸ ਨੂੰ ਸੋਝੀ ਹੋਵੇ ਜਦੋਂ ਇਹ ਸੰਸਾਰੀ ਜਿਹੜਾ ਬੰਦਾ ਹੈ ਸੰਸਾਰ ਆਇਆ ਹੈ ਇਹ ਜੀਉਦਾ ਸੋਝੀ ਨਾ ਜਾਂ ਇਸ ਨੂੰ ਸੋਝੀ ਸੋਝੀ ਹੁੰਦੀ ਹੈ ਤਾਂ ਜੀ ਜ਼ਬਰਦਸਤ ਜਾਏ ਸੋਚੀ ਹੁੰਦੀ ਐ ਤਾਂ ਇਹ ਮਰਜ਼ੀ ਛੜਦਾ ਸੋਚੀ ਕੀ ਹੁੰਦੀ ਐ ਇਹ ਦੋੰਦਿਆ ਵੀ ਜਿਹੜੀ ਮੇਰੀ ਮਰਜ਼ੀ ਐ ਇਹ ਹੀ ਸਾਰੀ ਵਰਜ ਜਿੰਨਾ ਮੇਰੀਆਂ ਮੁਸੀਬਤਾਂ ਨੇ ਉਹਦੀ ਜੜ ਮੇਰੀ ਮਰਜ਼ੀ ਜੇ ਮੈਂ ਮੁਸੀਬਤਾਂ ਤੋਂ ਖੜਾ ਛੜੋਲੇ ਮਰਜ਼ੀ ਨੂੰ ਜੜੋਂ ਹੀ ਕੱਟ ਪੱਟ ਵਰਜਾ ਦਾ ਰੇਖ ਵਰਜਾ ਦੀ ਤੋਂ ਫਾਇਦਾ ਹੁੰਦੀ। ਹਾਂ। ਸਾਰੀਆਂ ਬਿਮਾਰੀਆਂ ਜਿਹੜਾ ਤੋਂ ਫਾਇਦਾ ਹੁੰਦੀ। ਵਿਚਾਰ ਕੇ ਦੇਖ ਲਈਏ ਤੇ ਇਹ ਜੀ ਨੂੰ ਖੁਚਾਰ ਕੇ ਦੇਖ ਲੋ। ਕੱਦ ਲੜਾਈ ਇਹਦੇ ਵਿੱਚ ਬਾਹਰ ਲੜਾਈ ਇਹਦੇ। ਆਪਣੇ ਅੰਦਰ ਲੜਾਈ ਹੈ ਆਪਣੇ ਅੰਦਰ ਵੀ ਲੜਾਈ ਹੈ। ਜੇ ਅੰਦਰ ਦੀ ਲੜਾਈ ਬੰਦ ਹੋ ਗਈ ਜਦੋਂ। ਤਾਂ ਬਾਹਰ ਵੀ ਆਪਣੇ ਬੰਦ ਹੋ ਜਾਏ। ਮਰਜ਼ੀ ਦੇ ਉਹ ਮੀਂਹ ਉਹ ਹਲਤੇ ਹੈ ਮਰਜ਼ੀ ਚਲੋਣੇ ਜਾਂਦਾ ਅਰ ਜਗਾ ਹਾਂ ਜੀ ਆ ਮਰਜ਼ੀ ਹੋਣ ਦਾ ਹੀ ਗਰੋਧ ਆ ਹਾਂ ਰੋਗੂ ਕੀ ਮਨ ਭਾਉਂਦੇ ਜਾਂ ਬਹੁਤ ਕੋਈ ਔਖੀ ਵੀ ਨਹੀਂ ਹੈ ਪੁਆਇੰਟ ਤੇ ਕੇਂਦਰਿਤ ਹੋ ਕੇ ਇਹ ਲੋੜ ਜਈਦਾ ਪ੍ਰਚਾਰ ਸਿੱਖੀ ਦੇ ਲੋੜ ਹੈ ਵੀ ਹਰ ਬੰਦੋ ਇੱਕ ਬਾਣੀ ਦਾ ਹੀ ਪ੍ਰਚਾਰ ਕੀਤਾ ਰਿਹਾ ਜਿੰਨਾ ਵੀ ਪਿਛੋਂ ਲੋਕ ਬਾਣੀ ਪੜਉਂਦੇ ਨਾ ਕੋਈ ਪੜਿਆ ਹਦੀ ਪੰਜਾਬੀ ਨਹੀਂ ਸੀ ਪੜਿਆਏ ਜਿਹੜੇ ਘੋੜਿਆਂ ਨੇ ਕਾਠੀ ਹਤੇ ਰਹਿੰਦੇ ਸੀ ਟਾਈਮ ਕਿੱਥੇ ਮਿਲਿਆ ਸੀ ਪੜਨ ਦਾ ਚੱਕੀ ਜਿਹਾ ਸੋ ਗਿਆ ਬਸ ਕੋਈ ਗੱਲ ਸੀ ਬਾਣਾ ਵੱਲੋ ਬਸ ਜੋ ਹੋ ਰਿਹਾ ਉਹਦਾ ਬਾਣਾ ਉਹ ਤੇ ਰਸਤਾ ਸਿਰੇ ਤੇ ਕੰਢਾ ਅਸਲ ਤਾਂ ਪਾਣੀ ਨਹੀਂ ਮਿਲਦਾ ਹੁੰਦਾ ਵੀ ਪਾਣੀ ਆ ਪਾਣੇ ਮੰਨਣ ਵਾਸਤੇ ਸਾਰਾ ਗਿਆਨ ਕਰਾਇਆ ਸੋਝੀ ਕਾਹਦੀ ਕਰਾਈਆ ਪਾੜੋ ਮੰਨਣ ਵਾਸਤੇ ਜਾ ਦੇ ਨੂੰ ਸੋਝੀ ਉਹ ਆ ਜਾਂਦੀ ਹੈ ਫਿਰ ਕੀ ਕਰਦਾ ਫਿਰ ਇਹ ਆਪਣੀ ਬੱਦੀ ਛੱਡ ਕੇ ਪਾਣੇ ਜਾ ਜਾਂਦਾ ਆ ਹੀ ਸਾਰੀ ਗੁਰਬਾਣੀ ਦੇ ਸਮਝਣ ਦਾ ਪੜਨ ਦਾ ਰੈਂਡ ਕੀ ਹੈ ਕਿ ਪਾਣਾ ਮੰਨਵੇ ਔਰ ਜੀਵਤ ਮੰਨਵੇ ਇਹ ਐਨਾ ਕੁਝ ਪੜ੍ਹ ਕੇ ਸੁਣ ਕੇ ਵੀ ਪਾਣਾ ਮੰਨਣਾ ਹੀ ਨਹੀਂ ਫਿਰ ਉਹ ਬੇਫਾਇਦਾ ਲੋਖ ਗਿਆ ਤੀ ਤਾਂ ਹੁਜੂਕਰ ਰੱਟ ਕੁਝ ਨਹੀਂ ਹੁੰਦਾ ਜਮਣ ਵਰਤ ਨਹੀਂ ਛੱਡ ਸਕਦਾ ਪਰੇਸ਼ਾਨੀ ਰਹੂਗਾ ਜਾਤ ਨਹੀਂ ਸੁਵਾਲਿਆ ਪਾਸ ਹੋ ਰਿਹਾ ਜਗਾਏ ਤਾਂ ਕੱਤ ਨਹੀਂ ਸਵਾਲਿਆ ਜਾਂ ਤਨੀ ਸਵਾਲਿਆ ਤਾਂ ਸੌ ਰਹਾ ਉਹ ਤੋਂ ਬਾਅਦ ਹੈ ਦੁਚਿੱਤੀ ਚ ਡੀ ਰਹਿਦਾ ਤੰਗ ਧਰ ਕੇ ਜਾ ਕੇ ਸੋ ਗਿਆ ਤੇ ਭਾਣਾ ਬੰਦੇ ਸੁੱਤਾ ਪਿਆ ਰਾਮ ਕਰਦਾ ਦੇਖਦਾ ਸੁਪਨੇ ਦੇਖਣੇ ਬੰਦ ਕਰ ਦੇ ਅਜੇ ਜਾਗਿਆ ਨਹੀਂ ਐ ਸੌ ਗਿਆ ਸੌ ਜਾਗਿਆ ਮਾਇਆ ਕਦੀ ਮਾਇਆ ਕਰੀਓ ਤੇ ਜਾਗ ਗਿਆ ਵੀ ਸਪਨ ਦੇਖਣ ਦਾ ਮਾਰ ਸਾਜਿਕਰ ਇਧਰੋਂ ਜਾ ਗਿਆ ਇਹ ਨੂੰ ਮਿਸਲ ਟੰਗ ਤੱਕ ਜਰਾ ਆਇਆ ਹਾਂ ਇਹ ਇੱਥੇ ਹੀ ਹੈ ਮਾਇਆ ਕਰੀ ਬੇਫਿਕਰ ਹੋ ਜਾਣਾ ਮਾਇਆ ਕਰੀ ਜੋ ਹੋ ਰਿਹਾ ਹੈ ਕੀ ਹੈ ਸੌਣ ਸਮਾਨ ਹੋ ਗਿਆ ਸੌਣ ਨਹੀਂ ਆਇਆ ਸੌਣ ਸਮਾਨ ਹੋ ਗਿਆ ਸੋਦੇ ਸਬਾਤ ਐ ਸਮਝੋ ਜਿਹੜਾ ਹੋਇਆ ਉਹ ਜਿਹੜਾ ਸੰਸਾਰ ਜਿਹੜਾ ਹੈ ਉਹ ਜਿਹੜਾ ਨਾ ਹੋਇਆ ਰੋਇਆ ਬਰਾਬਰ ਹੈ ਸੰਸਾਰ ਤੇ ਜੱਟ ਆ ਕੋਈ ਜਿੱਦੀ ਮਰਜੀ ਹੁੰਦੀ ਇੱਥੇ ਉੱਥੇ ਹੋਇਆ ਰੋਇਆ ਬਰਾਬਰੀਆ ਜੇ ਬੈਠਾ ਵੀ ਰਹਿ ਜਾ ਉਹਨੇ ਵੋਟੇ ਨਹੀਂ ਪਾਉਣੀਆਂ ਸੀ ਉਹਦੀ ਕੀਮਤੀ ਕਿੱਥੇ ਕਰੂਗਾ ਤੁਸੀਂ ਇੱਧਰ ਸਾਨੂੰ ਇੱਧਰ ਸਾਨੂੰ ਇਹ ਸਵਾਲਿਆ ਮਾਇਆ ਵੱਲੋਂ ਆਉਂਦਾ ਨਹੀਂ ਸਵਾਲਿਆ ਤਾਂ ਸਵਾਲਿਆ ਉਹਨੇ ਹੈ ਵੀ ਤੂੰ ਆਰਾਮ ਕਰ ਤੂੰ ਰੈਸਟ ਕਰ ਪਰੇਸ਼ਾਨ ਨਾ ਹੋ ਜਿਹੜਾ ਜਾਗਦਾ ਪਰੇਸ਼ਾਨ ਪਾਇ ਚ ਇਹ ਆਨੰਦਾ ਪਰਮਨੰਦ ਨਹੀਂ ਹੈ ਹੂੰ ਦੁਖੀ ਬਣਾਤਾ ਸੋਰ ਦੇ ਵਿੱਚ ਆਨੰਦਾ ਪਰਮਨੰਦ ਨਹੀਂ ਆਏ ਜੇ ਪਰਮਨੰਦ त्यागे ਤੋਂ ਆਗੇ ਜਗਾਏ ਦਾ ਸੁਧ ਹੋਏ ਜਿਗਾਇਤ ਸਾਰੀ ਸੋਜੀ ਹੋ ਜਾਂਦੀ ਐ ਐਨਾ ਵੀ ਮਾਇਆ ਦੀ ਸੋਜੀ ਹੋਗੀ ਮਾਇਆ ਕਰਨੀ ਉਹ ਆਪਣੇ ਚੁਪ ਕਰਦਾ ਮਾਇਆ ਕਰਨੀ ਛੱਡ ਦਤਾ ਹੋਇਆ ਨਾ ਇਹਦੀ ਸਰੀਰ ਤੇ ਰਹਿੰਦਾ ਹੋਇਆ ਵੀ ਸਰੀਰ ਨਾਲ ਅਟੈਪਰੇਟ ਨਹੀਂ ਹੈ ਜਿ ਮਾਇਆ ਵਿੱਚ ਉਦਾਸੀ ਹੈ ਜਿ ਵੈਦ ਜਨਪਦਾਤ ਮਿਲ ਗਿਆ ਜਿਗਾਇਤ ਉਹ ਤਾਂ ਨਹੀਂ ਦਵਾਰ ਨਾਲੋਂ ਦਰਜੀ ਸਮਾਂ ਬਣੀ ਰਹਿੰਦੀ ਐ ਸਮਾਂ ਬਣੀ ਰਹਿੰਦੀ ਜੇ ਜਾਗ ਪਿਆ ਫਿਰ ਸੁਪਣਾ ਜ਼ਰੂਰ ਉਹ ਸੁਪਨੇ ਦੇ ਵਿੱਚ ਜਾਗਦਾ ਨਹੀਂ ਲੜਿਆ ਆਪਾਂ ਜਿਹੜਾ ਸੰਸਾਰੀ ਸੁਪਨਾ ਅੱਜ ਜਾਗੂ ਹੁੰਦਾ ਖੇਤੀ ਜਾਗ ਬੰਦਾ ਇਹ ਸੁਪਨੇ ਦੇ ਕਦੇ ਨਹੀਂ ਜਾਗਦਾ। ਸੁਪਨਾ ਬੰਦ ਹੋਏ ਤਾਂ ਸੌ ਕੇ ਫੇਰ ਜਾਗਦਾ। ਸੋ ਬਰੰਦ ਬੰਦ ਹੋ ਕੇ ਸੌਂ ਕੇ ਪੰਦ ਹੋ ਕੇ ਸੁੱਤਾ ਹੋ ਕੇ ਫਿਰ ਜਾਗਦਾ ਪਰ ਉਹ ਸੁਪਣੇ ਜਿਹਾ ਜਾਗ ਪੰਦ ਬੜਾ ਉਦਾ ਬੜਾ ਉਦਾ ਜਾਗ ਨੇੜੇ ਹੀ ਹੁੰਦਾ ਜਾਗਣ ਦਾ ਬੜਾ ਹੁੰਦਾ ਹੈ ਮੈਨਾਂ ਕੀ ਆਖਣਾ ਪਹੁੰਚ ਨਹੀਂ ਆ ਇਹ ਗੱਲ ਨੇੜੇ ਜਾਗਣ ਦਾ ਨੇੜੇ ਨੇੜੇ ਹੁੰਦਾ ਨਦਰ ਕਰੇ ਜੇ ਆਪਣੀ بے فکر ہو جاڑو سُتتا پھر دے اصل دے سُتتا نہیں ہے سُتتا میں بے فکر نہیں رہا تائیں من ہوڑا محسوس کردا ہے چنتا فکر کوئی نہیں ہوندا چنتا فکر اڑے چھوڑدا ہے دا جے پڑ رہی ہے اس کار دے ਗੁਰਬਿੰਦ ਨੂੰ ਨੀਂਦ ਆਉਂਦੀ ਹੈ ਗੁਰਬਿੰਦ ਨੂੰ ਨੀਂਦ ਕਿਤੇ ਹਰਾਤ ਨਾਲ ਹੁੰਦੀ ਹੈ ਗੁਰਬਿੰਦ ਨੂੰ ਨੀਂਦ ਆ ਬਈ ਬਸ ਜਾ ਕੇ ਤੇ ਮੈਨੂੰ ਨੀਂਦ ਨਹੀਂ ਆਉਂਦੀ ਨਾਨਕ ਨਦਰ ਕਿਸੇ ਦੇ ਨਾਲ ਲੱਗਿਆ ਪਿਆ ਹੋਵੇ ਨਾ ਨਿਆਣਾ ਛੋਟਾ ਉਹ ਆਰਾਮ ਨਾਲ ਸੁਜਦਾ ਔਰ ਜੇ ਕੱਲਾ ਹੋਵੇ ਡਰਦਾ ਉੱਠਦਾ ਰਹਿੰਦਾ ਇਹਦਾ ਉਹਦੇ ਵੀ ਅੰਦਰ ਵੀ ਭਾਵਨਾ ਜਾਗਦਾ ਤਾਂ ਹਾਂਜੀ ਅੰਦਰਲਾ ਸਕਦਾ ਹੋਰ ਸਰੀਰ ਦੀ ਦੇ ਦੀ ਲੋੜ ਅੱਛਾ ਵਾਅ ਉਹ ਕੱਲਾ ਨਹੀਂ ਜਾਂਦਾ ਕਦੇ ਹੂੰ ਕੱਲਾ ਬਚਨ ਮਰੇ ਹਟਾ ਕੇ ਵੀ ਹੋ ਸਕਦਾ ਕੱਲੇ ਨੂੰ ਤਾਂ ਰੋਣ ਨਹੀਂ ਆ ਸਕਦਾ ਤੇ ਛੋਟੇ ਛੋਟੇ ਬੱਚੇ ਆਈਓ ਸੇਫ ਮਹਿਸੂਸ ਕਰਦਾ ਨਾਲ ਲਾ ਕੇ ਕੱਲਾ ਹੋਣ ਦਾ ਸੇਫ ਹਮੇਸ਼ਾ ਆਪਣਾ ਸੇਫ ਪਰੇ ਪਰੇ ਰੋਣ ਕਿਉਂ ਲੱਗ ਜਾਂਦਾ ਕੱਲਾ ਬੋਲ ਕੇ ਗੋਦੀ ਚੜਨਾ ਤਾਂ ਹੀ ਕਿਉਂਦਾ ਸੇਫ ਹਾ ਤੇ ਸੇਵ ਇਹ ਚੱਕਿਆ ਫੜ ਕੇ ਵੀ ਰਹਿ ਜਾਂਦਾ ਨਹੀਂ ਸੱਟ ਬਣਾਦਾ ਮੇਰੇ ਲੋਕਾਂ ਨੂੰ ਰੋਸਾ ਨਹੀਂ ਕਰਦਾ ਵੀ ਇਹ ਬੜੀ ਢਿੱਲੀ ਕਰਦੀ ਮੇਰੇ ਕੋਲ ਫੜ ਕੇ ਰਹਿ ਉਹਨਾਂ ਗਿਆਨ ਉਹਨੂੰ ਵੀ ਐ ਦੇਖੋ ਆਪਣਾ ਜੋਗਾ ਗਿਆਨ ਉਹ ਰਹਿ ਜਾਂਦਾ ਜਿਹੜਾ بڑا ਹੁੰਦਾ ਗਿਆਨ ਵਧੀਆ ਵਧੀਆ ਮੰਤਰ ਸਰਬ ਕੋ ਗਿਆਨ ਨਾਨਕ ਨਜ਼ਰ ਕਰੇ ਜੇ ਆਪਣੀ ਸਾਧੂ ਮੇਲਾ ਸੋਇ ਨਾਨਕ ਨਦਰ ਕਰੇ ਜੀ ਆਪਣੀ ਨਾਨਕ ਕਹਿੰਦਾ ਜੀ ਆਪਣੀ ਤਰਫ ਨਦਰੇ ਕਰ ਉਹ ਅਗੇ ਨਜ਼ਰ ਵਾਲੀ ਕਰ ਨਦਰ ਕਿਵੇਂ ਕਰੂਗਾ ਤੇ ਪਾਦਰਸ਼ਟੀ ਹਾਸਲ ਕਿਵੇਂ ਕਰਨੀ ਹੈ ਇਹਦੇ ਖਾਤਰ ਸਾਰਾ ਉਪਰਾਲਾ ਕਰਨ ਦੀ ਲੋੜ ਹੈ ਉਹ ਵੀ ਕਿਵੇਂ ਕਰਨਾ ਕੋਲ ਆਪਣੀ ਆਪਣੀ ਹੁਣ ਆ ਜਾਣੀ ਉਹਦੀ ਨਦਰ ਚ ਆ ਜਾਣੀ ਨਜ਼ਰ ਕਰੇ ਜੇ ਆਪਣੀ ਆਪਣੀ ਕਿਹਦੇ ਸੈਂਸ ਚ ਹੈ ਕੌਣ ਨਜ਼ਰ ਕਰੇ ਜੇ ਆਪਣੀ ਆਪਣੀ ਕਿਹਦੇ ਵਾਸਤੇ ਹੈ ਆਪਣੇ ਤੇ ਇੱਕ ਹੋ ਗਿਆ ਇਹਦੇ ਨੂੰ ਨਾ ਰੋਣੀ ਜਾਂ ਸੁਤਾ ਫਿਰ ਆਪਣੀ ਹੁਕਮ ਦੇਉਂਦੇ ਹੁੰਦੇ ਹੁਕਮ ਨਹੀਂ ਦੇਉਂਦੇ ਇਹ ਸੱਚ ਹਨ ਕਿ ਉਹਨਾਂ ਜਦੋਂ ਅਰਾਧਨਾ ਹੁੰਦੀ ਹੈ ਅਰਾਧਨਾ ਹੁੰਦੀ ਜਦੋਂ ਪਦਾਰਥ ਸੱਚ ਗੱਲ ਹੈ ਉਹ ਵੇਕੇ ਨੂੰ ਫਰਮਾਨ ਜਿਹੜਾ ਹੋਣਾ ਵੇਕੇ ਨੂੰ ਫਰਮਾਨ ਉੱਥੇ ਹੀ ਹੋਣਾ ਇਹ ਤਾਂ ਨਹੀਂ ਹੋਣਾ ਇਹ ਤਾਂ ਆ ਵਰਸਣਾ ਕਿਸੇ ਹੋਰ ਤੇ ਆ ਇਹ ਤੇ ਵਰਸਣਾ ਹੋਵੇ ਤੇ ਵਰਸਣ ਅਗਲੇ ਸਤਗੁਰੂ ਦਾ ਸਤਗੁਰੂ ਮੇਲਾ ਸੋਇ ਸਤਗੁਰੂ ਮੇਲਾ ਸੋਇ ਉਹ ਸਤਗੁਰੂ ਨੂੰ ਜਿਹੜਾ ਮੇਲਾ ਹੈ ਉਹ ਵੀ ਤਾਂ ਦਰਨ ਨਾਲ ਹੀ ਮਿਲਣੇ ਹਾਂ ਸੋਇ ਸਤਗੁਰੂ ਸਤਗੁਰੂ ਰੇ ਇੱਕ ਇੱਕ ਸਿੱਖ ਹੈ ਸਿੱਖ ਹੈ ਸਤਗੁਰੂ ਸਤਗੁਰੂ ਸਿੱਖ ਤੇ ਬੰਦਨ ਬੰਦਨ ਪਾਟਾ ਗੁਰਪ੍ਰਸਾਦ ਜੀ ਜਦੋਂ ਮਿਲਦਾ ਤਾਂ ਬੰਦਰ ਉਹ ਘਟਦਾ ਫਿਰ ਮਾਇਆ ਦੇ ਬੰਦਰ ਮਾਇਆ ਦੇ ਬੰਦਰ ਨੇ ਗੁਰਪ੍ਰਸਾਦ ਜੀਬਤ ਮਰਿਆ ਤਾਂ ਫਿਰ ਮਰਨ ਨਾ ਹੋਏ ਗੁਰਪ੍ਰਸਾਦ ਇਹ ਤਰੀਕੇ ਨਾਲ ਜਿਹੜਾ ਹੋਊਗਾ ਗਿਆਨ ਦੀ ਸਮਝ ਨਾਲ ਗਿਆਨ ਦੀ ਉਹ ਗਿਆਨ ਦੀ ਜਿਹੜੀ ਸੋਚੀ ਹੈ ਸੱਚੇ ਉਹਦੇ ਨਾਲ ਇਹ ਐਂ ਕਹ ਗਿਆਨ ਦੀ ਖੇਪਾ ਜੀ ਕਿ ਸੇ ਬੰਦੇ ਦੇ ਕਿ ਪਰਵਾਹ ਨਹੀਂ ਉਹ ਕੋਈ ਸੇ ਬੰਦੇ ਨੂੰ ਕਹ ਉਹ ਬੰਦਾ ਤਾਂ ਸਾਰੇ ਰੂਹ ਕੱਢ ਤੂਗਾ ਗੁਰਦੇ ਨਾਲ ਸੱਤ ਲੱਗ ਗਿਆ ਸੱਤ ਬੋਲ ਤਾਂ ਫਿਰ ਮਰਨ ਨਾ ਹੋਏ ਫਿਰ ਗੁਰ ਪ੍ਰਸਾਦਿ ਆਇਆ ਲੋ ਤੂੰ ਪ੍ਰਸਾਦ ਇਹ ਜਿਹੜਾ ਤਾਂ ਫਿਰ ਮਰਨ ਨਾ ਹੋਏ ਇਹ ਫਿਰ ਕਿਹੜੇ ਮਰਨ ਦੀ ਗੱਲ ਹੈ ਤਾਂ ਫਿਰ ਮਰਨ ਨਾ ਹੋਏ ਤੇ ਫਿਰ ਸੌਂਦਾ ਨਹੀਂ ਦੁਬਾਰਾ ਕੀ ਮਰਨ ਉਹਦੇ ਆਊਗਾ ਮਰਨ ਹੋਏ ਜੀਵ ਜਾਦੂ ਹੋ ਗਿਆ ਜਾਂਦੇ ਤੋਂ ਕਪੜੇ ਹੋ ਗਏ। ਅੱਧੇ ਦਾ ਮੋਰ ਨੂੰ ਦਾਦ ਨੂੰ ਮਰਦਾ ਹੀ। ਤੇਰੀ ਜਿਹੜਾ ਜੰਮਣ ਬੰਨ ਵਾਲਾ سلسلہ ਅਸਲ ਦੇ ਵਿੱਚ ਇਹ ਜੋਗਾ ਹੀ ਹੋ ਗਿਆ ਵਰਕੇ। ਸੋਜੀ ਦੇ ਸੁਣ ਸੁਣਦਾ ਤੇਰਾ ਬਾਬਾ। ਤੋਂ ਬਾਅਦ ਕਰਦੀ ਉਹ ਸਾਰਾ ਜੀਵਨ ਹੈ ਹਾਂ ਜਿਵੇਂ ਉਹ ਜੀਵ ਹੈ ਜੀਵੇ ਨੇ ਜਿਵੇਂ ਉਹ ਜੀਵੇ ਹੋ ਗਿਆ ਉਹ ਜੀਵਨ ਤਾਂ ਹੋਰ ਤਰ੍ਹਾਂ ਦਾ ਜੀਵ ਜੀ ਪਿਆ ਕਿਹੜਾ ਲਗਾ ਤਾਂ ਫਿਰ ਮਰਨ ਪੌਦਾ ਹੈ ਅਸਲ ਚ ਬੜਿਆ ਉਦੋਂ ਜੀਵਨ ਹੋਇਆ ਅਸਲੀ ਜੀਵ ਪੌਦੇ ਦਾ ਦਾਣੇ ਦਾ ਜੀਵਨ ਜੀਵਨ ਦੇ ਉੱਤੇ ਜੀਵਨ ਹੁੰਦਾ ਹੋਇਆ ਵੀ ਜੀਵਨ ਦੀ ਜੀਵਤ ਨਹੀਂ ਹੁੰਦਾ ਦਾਣੇ ਜੀਵ ਹੁੰਦਾ ਹੈ ਜੀਵ ਹੋਣਾ ਹੋਰਗਾ ਲੈ ਜੀਵ ਤੋਂ ਹੋਣਾ ਹੋਰਗਾ ਜੀਵਤ ਨੂੰ ਕੋ ਲੱਗਦੀ ਹੈ ਜੀਵ ਤਰੂ ਪਿਆਸ ਲੱਗਦੀ ਜੀਵ ਨੂੰ ਨਹੀਂ ਲੱਗਦੀ ਜਦ ਪੌਦਾ ਹੁੰਦਾ ਹੈ ਪੌਦੇ ਦੀ ਅੱਖਾਂ ਵੀ ਨੇ ਅੱਖਰ ਦਾ ਜਿਵੇਂ ਇੱਕ ਬੱਚੇ ਦਾ ਫਰਕ ਹੈ ਅੰਡੇਰ ਬੱਚੇ ਚੂਚੇ ਦਾ ਚੂਚੇ ਦਾ ਬੱਚਾ ਅੰਦਰ ਵੀ ਔਰ ਬੱਚਾ ਅੰਡੇ ਦੇ ਵਿਚਾਰ ਦੇ ਬਾਹਰ ਉਹ ਵੀ ਫਰਕ ਹੈ ਪੱਛਾ ਦਾ ਪੂਰਨ ਵੱਡ ਗਿਆ ਸਾਲਮ ਵੱਡ ਗਿਆ ਪਰ ਅੰਡੇ ਤੋਂ ਬਾਹਰ ਗਿਆ ਉਹ ਨਾ ਚਿਰ ਜੀਵਤ ਨਹੀਂ ਆ ਗਿਆ ਬੰਦ ਐ ਰੋ ਬਾਹਰ ਨਹੀਂ ਦੇਖਿਆ ਨੇ ਅੰਡੇ ਬੰਦ ਐ ਇਹ ਸੰਸਾਰ ਅੰਡੇ ਜਦੋਂ ਹੀ ਆ ਪਾਵ ਜਿਹੜਾ ਇਹ ਮੁਰਗੀ ਦੇ ਵਿੱਚ ਆਂਡਾ ਹੈ ਆਂਡੇ ਦੀ ਨਿਆਈ ਜਣੀ ਗਿਆ ਭੈ ਕਹ ਲਈਏ ਦੇ ਵਿੱਚ ਹੀ ਹੈ ਜਦੋਂ ਲਈ ਜਾਂਦਾ ਪਰਮ ਦੇ ਅੰਡੇ ਦੇ ਵਿੱਚ ਹੀ ਹੈ ਪਰ ਉਹਦਾ ਆਂਡਾ ਢਾਵੜਾ ਹੋ ਜਾਂਦਾ ਇਹਦਾ ਆਕਾਰ ਉਹਦੇ ਵਿੱਚੇ ਬਸਦਾ ਰਹਿੰਦਾ ਕਿੱਡਾ ਜਰੂਰ ਤੋਂ ਪਹਿਲਾਂ ਇਹਦਾ ਆਕਾਰ ਕਿੱਡਾ ਹੋ ਜਾਂਦਾ ਸਵਾਲ ਹੈ ਜਰੂਰ ਤੋਂ ਪਹਿਲਾਂ ਇਹਦਾ ਆਕਾਰ ਐਡਾ ਹੋ ਜਾਂਦਾ ਹੈ ब्रह्म का इनके मन प्रकाश आ जैसे ता प्रकाश बड़ा अड़ारदार ले रहा है वो होने मतलब सूझ ही नहीं प्रकाश रूप हो जाता है जो प्रकाश है ਗੋਤਾਲੋ ਜੀਵ ਮੰਤੂ ਜੋਤ ਇਹ ਗਿਆਨ ਦਾ ਦਰਵਾਜਾ ਮੰਤੂ ਜੋਤ ਸਰੂਪ ਹੈ ਗਿਆਨ ਦਾ ਦਰਵਾਜਾ ਜੋ ਪਰ ਪੜ ਦੇ ਵਿੱਚ ਹੈ ਬਾਇਆ ساری ਬਾਇਆ ਦਾ ਨੂੰ ਗਿਆਨ ਹੋ ਜੀ ਕੁਝ ਵੀ ਬਾਹਰ ਨੂੰ ਭਲੇਖਾ ਨਹੀਂ ਦੇ ਦੋ ਤੇ ਆਪਣੇ ਬਾਰੇ ਨਾ ਬੈਂਡਰ ਬਾਰੇ ਜਿੰਨਾ ਜਰ ਆਪਣੇ ਬਾਰੇ ਉਹਦਾ ਜਨਰੇ ਦੇ ਵਿੱਚ ਭਰਮ ਹੈ ਪੂਰਾ ਹੈ ਮਕਸਦ ਨਹੀਂ ਹੈ ਵਿਕਸਤ ਨਹੀਂ ਹੈ ਇਹਦੇ ਵਿੱਚ ਕੀ ਹੈ ਸੰਸਾਰ ਦੇ ਸੰਸਾਰ ਦੋ ਚੀਜ਼ਾਂ ਇੱਕ ਤਾਂ ਹੈ ਫੇਕਾ ਦੁਆ ਮਾਇਆ ਝੂਠਾ ਆਤਮ ਸਤ ਸਤ ਸਰੂਪ ਸੱਚ ਹੈ ਸਤਿ ਗੁਰੂ ਸਰ ਫਿਰ ਮਾਇਆ ਦਾ ਚਲ ਪੰਜ ਤਤਾਂ ਜਿ ਆਪਣਾ ਦੇ ਰਿ ਲਈ ਵਿਚਾਰ ਪਾਸਨੇ ਪੰਜ ਬਾਹ ਕਾਇਤਾ ਤਾਂ ਸਭ ਜੀ ਇਹ ਸਾਰੇ ਇਹੀ ਹੈ ਚਲੋ ਉਹ ਤਾਂ ਛੱਡਤੀ ਆਪਾਂ ਜੀ ਲੋਣਾ ਸ਼ਰੀਰ ਦੇ ਵਿੱਚੋਂ ਪਦਾਰਥ ਖਾਡਿਆ ਸੂਰਜ ਕਮੇ ਬਣਾਇਆ ਕਿ ਆਪਾਂ ਰਕੀ ਲੜ ਹੈ ਆਪਾਂ ਅਗੜੇ ਤੇ ਰਹਿਣਾ ਜਿਹੜਾ ਰਹਿਣਾ ਉਹ ਦਿੰਦਾਰੇ ਇਹਨੂੰ ਸੂਰਜ ਤੋਂ ਫਰਕ ਉਹ ਜਿਹੜਾ ਜਿਹੜਾ ਛੱਡਿਆ ਕਰ ਉਹਦਾ ਰਹਿਣਾ ਕਿਦੋਂ ਜਿਹੜਾ ਗਰਾਉਂ ਛੱਡ ਦਿੱਤਾ ਆਪਾਂ ਉਹਦਾ ਲੋਹ ਰੋਮਸ਼ਰਤਾ ਉਹ ਉਹਦੀਆਂ ਗੜੀਆਂ ਤੇ ਚੀਏ ਨੇ ਪੱਕੀਆਂ ਨੇ ਤੰਦ ਦੇ ਨੇ ਜੀ ਦਾ ਪਰ ਗਿਣਾ ਲੋ ਜਿਹੜਾ ਜੀ ਦਾ ਪਾ ਲੈ ਰਹੀ ਆਪਾਂ ਜਿਵੇਂ ਸੁਣ ਪੀ ਹਾਂਜੀ ਬਾਕੀ ਰਹਿ ਗਿਆ ਹੱਥ ਕੋ ਦੋ ਹਿੱਸਿਆਂ ਚ ਦੋ ਇਸੇ ਕੋ ਆਤਮ ਚੀਨ ਜਦ ਆਤਮ ਚੀਨ ਪ੍ਰਾਤਮ ਚੀਨ ਲੈ ਫਿਰ ਇਹ ਦਾ ਬਰਮਗਾਨੀ ਦਾ ਮਾਮਲਾ ਆ ਜੇ ਤੇ ਲੋੜ ਨਹੀਂ ਮੈਟਰ ਕੇ ਦੇਖਿਆ ਹੁੰਦਾ ਤੇ ਵਿਚ ਪੜ ਕੇ ਵੀ ਦੇਖਿਆ ਹੁੰਦਾ ਦੇਖਣੀ ਹੈ ਤਾਂ ਕੀ ਹੈ ਨਾ ਤੇਰੇ ਜੇ ਜਲਣ ਯਾ ਲਗਾ ਲੈ ਜਾਂ ਭਾਈ ਬਾੜੀ ਦੇ ਰੁਕ ਰੋ ਜੇ ਦੇਖ ਲੈ ਰਾਹ ਕੀ ਦਿਖਣਾ ਇਹਦਾ ਆਹ ਰਾਹ ਦੇਖਣਾ ਬੜੀ ਸਾਰੀ ਜਲ ਆਗਿਓ ਵਿੱਚ ਰਹਿ ਫਿਰਦੇ ਨੇ ਪਤਾ ਜੀ ਆਪਣੇ ਬੱਚੇ ਨੂੰ ਆਪ ਕਰਦੇ ਖਾ ਜਾਂਦੇ ਨੇ ਉਹਨਾਂ ਦਾ ਪੱਕੀ ਭਾਰਾ ਦਿੰਦੇ ਕਿ ਉਹ ਪੜ੍ਹਦਾ ਹੀ ਨਹੀਂ ਜਿੱਦੀ ਹੈਗੇ ਜਾਂ ਉਹਨਾਂ ਨੂੰ ਦੇ ਹੈ ਨਹੀਂ ਸਾਡੇ ਤੋਂ ਦੇ ਜਾ ਦੇ ਬੱਚੇ ਨੇ ਕਾਹ ਨੂੰ ਸਮਝ ਦੇਣ ਵਾਂਦੇ ਜਿਵੇਂ ਅਸੀਂ ਸਮਝਦੇ ਹਾਂ ਜਾਇ ਆਪਣੇ ਖਾਏ ਆਦਮੀ ਦੀ ਜੋ ਜਮਾ ਸਮਝਦੇ ਹੋ ਜੂਚੀ ਬੜਾ ਜਿਹਾ ਬਸਤਾ ਰਹੇ ਉਹ ਦਿਮਾਗ ਹੈ ਨਾ ਉਹ ਆਪਣੀ ਮਰਜ਼ੀ ਕਰਦਾ ਰੱਬ ਦੀ ਮਰਜ਼ੀ ਕਰਦਾ ਚਾਹ ਹੋਰ ਕੀ ਹੈ ਦੇ ਵੀ ਬਾਰੇ ਨਾਲ ਦਾ ਬੋੜੀ ਜੜ ਜੇ ਬੀਤੇ ਜਿਹੜੀ ਚੀਜ਼ ਆਪਣੀ ਸਮਝਦਾ ਵੀ ਮੈਂ ਜਿਹੇ ਖਾ ਲਵਾਂ ਉਹ ਠੀਕ ਉੱਤੇ ਕੋਈ ਵੀ ਆਪਣੇ ਬੱਚੇ ਖਾਣਦੇ ਚਾਹੇ ਕੁਛ ਹੋਰ ਆਦਮੀ ਆਪਣੀ ਆਪਣਾ ਭਟਾ ਦੇ ਬਾਅਦ ਕਿਹਨੇ ਖਾਣਾ ਇਹਨੂੰ ਖਾਣਾ ਹੁਣ ਕਿਤੇ ਜੂਲ ਖਾਧਰ ਨਹੀਂ ਜਾ ਆਪਣੇ ਜੀਵ ਖਾਧਰ ਜੀ ਜੀ ਹੁੰਦੇ ਜੋ ਵੀ ਕੁਝ ਕਰਦੇ ਨੇ ਉਹ ਭਾੜੇ ਦੇ ਉਹਨਾਂ ਦਾ ਵਿਸਾਲ ਵੀ ਉਹਨਾਂ ਦੀ ਇਤਾਬ ਕੀਤੀ ਹੈ ਜਾਇ ਆਪਣੇ ਖਾਏ ਸੜਪੜੀ ਹੋ ਕੇ ਉਤਰੇ ਅਸੀ ਨਹੀਂ ਕਿਤਾਜਾ ਖਾਣ ਜਾਇ ਖਾਣ। ਨਾ ਆਸੀ ਆਪਣੇ ਜਾਇ ਖਾਂਦੇ ਆ। ਆਹ ਸਾਨੂੰ ਖਾਣੇ ਯੋਗ ਨਹੀਂ। ਸਾਰੇ ਜਾਈ ਖਾਂਦੇ ਆਪਣੇ ਸਾਰੇ ਨਹੀਂ ਮੁਰਗੀ ਵਰਜਵੇ ਬਚਨ ਚੱਕਰੁਦੋਦੀ। ਆਂਡੇ ਰੰਗ ਨੀ ਲੈ ਆਉਂਦੀ। ਪੁੱਛੇ ਕੁੱਤੀ ਨਹੀਂ ਜਕੜਨਦੀ। ਨਾ ਵੀ ਨਹੀਂ ਲੈਣਦਾ। ਅਰੇ ਨਹੀਂ ਪਰ ਜਿਹੜੇ ਹੈਗੇ ਉਹਨਾਂ ਦੀ ਦੰਦਿਆ ਹੋ ਰਹੀ ਹੈ। ਅਸਲੀ ਗੋੜ ਆਦਮੀ ਦੇ ਦੀ ਸ਼ੁਰੂ ਆਦਮੀ ਕਹਦਾ ਉਹ ਜਾਨਵਰ ਨਹੀਂ ਕਰਦਾ ਸਮਝਿਆ ਬਿੱਲਾ ਆਪਣੇ ਬੱਚਾ ਨੂੰ ਖਾ ਜਾਂਦਾ ਮਿੱਲੀ ਨਹੀਂ ਹੁੰਦੀ ਬਿੱਲਾ ਵਾਹ ਲਗਾ ਜਾਂਦਾ ਬਿੱਲਾ ਖਾ ਜਾਂਦੇ ਲੋਹਰਾਂ ਦੇ ਉਹਦੇ ਸੁਭਾਅ ਦੇ ਕੋਈ ਨਵੀਂ ਨਹੀਂ ਹੁੰਦਾ ਸਮਝ ਆ ਵੀ ਨਾਲ ਨੂੰ ਮਦੀਨ ਨੂੰ ਮਦੀਨ ਨੂੰ ਨਹੀਂ ਖਾਂਦਾ ਨਾਲ ਖਾਂਦਾ ਬਿੱਲਾ ਵੀ ਆਪਣੇ ਬੱਚੇ ਚੋਂ ਮਦੀਨ ਨੂੰ ਨਹੀਂ ਖਾਦਾ ਲਰ ਨੂੰ ਖਾਦਾ। ਦੱਸੂ ਖਾਦਾ। ਇਹ ਉਹ ਸਮਝ ਕਿਨੇ ਪਾਈ ਹੈ ਸਮਝ। ਕਿਨੇ ਪਾਈ ਹੈ ਸਮਝ। ਆਹ ਜਾਨਵਰਾਂ ਚੋ ਵੀ ਸਾਨੂੰ ਗੇਰ ਬੜਦਾ। ਇਹਦੇ ਪਿੱਛੇ ਕੌਣ ਨਾਲ ਕਰਦੀ ਹੈ? ਕੀਲੀ ਅਕਲ ਕਰਦੀ। ਕੋਲ ਅਸੀਂ ਜਾਏ ਆਪਣੇ ਸਾਹ ਨੂੰ ਤਾਂ ਕਹਿੰਦੇ ਆ ਪ੍ਰਮਾਣ ਦਿੱਤਾ ਹੈ। ਸਭ ਲੋਕੀ ਚੰਗਰੀ ਸਮਝਦੇ। ਅਸਾਪੀ ਖਾਂਦੀ ਐ ਤੇ ਸਪਨੀਓਂ ਖਾਂਦੀ ਐ ਜਿਹੜੇ ਬੰਦੇ ਆਦਮੀ ਹੋ ਕੇ ਆਦਮੀ ਨੂੰ ਜੰਗ ਦੇ ਜਾਲ ਵਿੱਚ ਫਸੋ ਦੇਣੇ ਉਹ ਸਰਪੜੀ ਦਾ ਸਵਾਇਪਰ ਐ ਐਨਰੋ ਬਾਜਣ ਤੇ ਸਿਕਦਾਨਾ ਕਿੰਨਾ ਪੜਿਆ ਲੋ ਪਾਣੀ ਲੱਗੀ ਜਾ आई लगी जात बाहर आप नहीं करते चाहे जबले जाल बिछा के अपने नु गलत प्रचार करके जान के फसोदे पता लगे ते बाद भी ये गलत प्रचार है फसा है जात नहीं ए दफा लगनी है ओदे सच बणते है तो हर लगी हुई समझो अपने ਤੋ ਕਾਨੂੰਨ ਤਾਂ ਬਣੇ ਬੜਿਆ ਐ ਇੰਨੇ ਆਰਟੀਕਲ ਦੀ ਇੰਨੀ ਧਾਰਾ ਜੋ ਹੋਇਆ ਐ ਇਹੇ ਦਫਾ ਵੀ ਲੱਗੀ ਹੁੰਦੀ ਐ ਸਾਰਿਆਂ ਜਿਹੜਾ ਜਿਹੜੇ ਕੰਮ ਕਰਦਾ ਵਧੀ ਹੋ ਗਿਆ ਉਹ ਤਰੇ ਭਾਰਤ ਸੈਮਨ ਜਾ ਪਹਿਲਾਂ ਹੀ ਉਹਦੇ ਤੇ ਕਿਸੇ ਕਿਸਮ ਦਫਾ ਤੋਂ ਪਹਿਲਾਂ ਹੁੰਦੇ ਲੱਗਿਆ ਵੀ ਉਹ ਦਫਾ ਨੂੰ ਫਜਨੀਆਂ ਲੜਾਂ ਦਫਾ ਬੰਦ ਕੇ ਚੱਲਣਾ ਵੀ ਦਫਾ ਲੱਗੀ ਹੋਈ ਏ ਸਾਡੇ ਤੇ ਉਹਨਾਂ ਬੰਦਿਆਂ ਤੇ ਦਫਾ ਲੱਗੀ ਹੋਈ ਹੈ ਸੰਤਾ ਤੇ ਦਫਾ ਲੱਗ ਗਈ ਜੋ ਬੰਦਿਆਂ ਤੇ ਦਫਾ ਲੱਗ ਗਈ ਜਿਹੜੇ ਕੀ ਕਰਦੇ ਨੇ ਵੇਖ ਦਿਖਾਏ ਜੰਤ ਕੋ ਲੋਕਾਂ ਕੋ ਬਸ ਕੀਰ ਜਿਹੜੇ ਇਹ ਦਵਾ ਇਹ ਫਰਮਾਨ ਦਰਗਾਹ ਦਾ ਆਦਮੀ ਦਾ ਜਿਹੜਾ ਕੇ ਕਰਨਾ ਹੁਕਮ ਹੈ ਦਰਗਾਹ ਦਾ ਹੁਕਮ ਹੈ ਜਿਵੇਂ ਬੰਦੇ ਦਾ ਨਹੀਂ ਹੈ ਜੇ ਐ ਕਰੂ ਤਾਂ ਐ ਹੋ ਜੇ ਐ ਕਰੂ ਤਾਂ ਐ ਹੋਊ ਉਹ ਦਿਨ ਹਾਂ ਵੀ ਲੀ ਕੀ ਹੋ ਜੇ ਉਹ ਰੇਚ ਆ ਜੂਗਾ ਜਜ਼ੀਆ ਦੇਖਣ ਤੋਂ ਪਾਣੀ ਪੜਾਉਂਗੇ ਤਾਂ ਇਹ ਕੰਮ ਕਰ ਨਹੀਂ ਕੱਢੋਗੇ ਵਰਨਾ ਅਸੀਂ ਇਹ ਐਸੇ ਕੋਲ ਤੋਂ ਪ੍ਰਚਾਰ ਕਰਾਂਗੇ ਤਾਂ ਕੰਬੂਰ ਉਹਦਾ ਫਿਰ ਫਿਰ ਕਾਬੂ ਜਾਣਗੇ ਉਹ ਆਪ ਤੇਰੇ ਪੀਤਰ ਤੁੰਪਾ ਪਾਹ ਉਹਦਾ ਪਟਕਾ ਰਿਹਾ ਨਾ ਜਦ ਪ੍ਰਚਾਰ ਹੁੰਦਾ ਸੀ ਅੰਦਰੇ ਪਾਪ ਕੰਬ ਗਏ ਉਹਦੇ ਸਾਰੇ ਜਿਹੜੇ ਤਨ ਉਹਦੇ ਪਾਪ ਕੰਬ ਗਏ ਜਾਂ ਅੰਦਰ ਪਹਿਲੇ ਇਹਦਾ ਹੂ ਮਤ ਕਰੋ ਜਰੂਰ ਹੱਦੋਂ ਬੰਦ ਕਰੋ ਇਹ ਤਾਂ ਵਿਆਪਨ ਕਰਦਾ ਸੀ ਪ੍ਰਚਾਰ ਕਰਨੇ ਤਾਂ ਵੀ ਕਰਦਾ ਸੀ ਬਦਰਾਮ ਵੀ ਆਪਣੀ ਹਿੰਦੀ ਦੇਖ ਕੇ ਬੈਰ ਖੜਾ ਕਰਦੇ ਹੋਰ ਬੁੱਧ ਪ੍ਰਸ਼ਟੋਮੇ ਮਜਾ ਆਇਆ ਤਾਂ ਕਰਨ ਨਾਲ ਟਕਰਾਂਗੇ ਸੱਚ ਨਾਲ ਟਕਰਾਂਗੇ ਫਿਰ ਕੀ ਹੁੰਦਾ ਫਿਰ ਕੀ ਹੋਵੇ ਪਰ ਮੈਂ ਦੇਖ ਕਿਤੇ ਰਿਹਾ ਰਾਜ ਕਿਤੇ ਰਿਹਾ ਲਾਲ ਗਲੇ ਦੇ ਕਬੂਤਰ ਮਿਠਾ ਕਰਦੇ ਨੇ ਹੂੰ ਲਾਲ ਗਲੇ ਦੇ ਕਬੂਤਰ ਮਿਠਾ ਕਰਦੇ ਜਿੱਥੇ ਉੱਥੇ ਕੀ ਗੁਰਦੁਆਰਾ ਗੁਰਦੁਆਰਾ ਢੰਡਾ ਅਮਾ ਤੇ ਦੇਖ ਪਰसों ਜਿੱਥੇ ਕਿਲਾ ਦੀ ਬਿਜਦੇ ਤਾਂ ਫਿਰ ਉਹ ਤਨ ਕੇਸਰੀ ਨਿਸ਼ਾਨ ਚੋਗੇ ਕੇਸਰੀ ਨਿਸ਼ਾਨ ਚੋਗੇ ਫਿਰ ਕੀ ਹੋ ਗਿਆ ਰਹਿ ਗਿਆ ਉਹ ਕਿੰਨਾ ਚਿਰ ਰਹੂਗਾ ਇਹ ਹੁਣ ਦੇਖਿਆ ਜਾਊਗਾ ਇਸੇ ਖਾਂਦੇ ਹੱਥ ਸੱਚ ਦਾ ਯਾਰ ਰਹੂਗਾ ਐ ਲੋਰਾ ਲੋਰਾ ਕੋਈ ਨਹੀਂ ਜਿਹਨਾਂ ਜੇ ਸੱਚ ਦਾ ਪੈਰਾ ਨੂੰ ਹਰਉਣ ਵਾਲਾ ਕੋਈ ਨਹੀਂ ਜਿੱਦਾਂ ਇਹ ਇਹਨਾਂ ਦੇ ਪੈਰਾਂ ਤੇ ਲੂ ਹਾਂ ਤਾਂ ਇਹਦੇ ਇਹਨਾਂ ਦੇ ਪੈਰਾਂ ਇਹ ਨਾਲ ਬਾਰੇ ਇਹਨਾਂ ਦੀ ਗਲਤੀ ਹੋਈ ਜੀ ਇਸ ਘਰ ਕੋ ਆਗ ਲੱਗੀ ਹੈ ਇਸ ਘਰ ਦੇ ਚਿਰਦਰ ਜੇ ਸਿੱਖੀ ਦਾ ਜੁਰਖਸਾਨ ਹੋਇਆ ਸਿੱਖਾਂ ਨੂੰ ਕੀਤਾ ਕਿਸੇ ਨੂੰ ਨਹੀਂ ਕੀਤਾ ਉਹ ਕੰਪਨੀ ਨਾਲ ਆ ਕੇ ਹੋ ਨਹੀਂ ਸਕਿਆ ਨੁਕਸਾਨ ਬੰਦ-ਬੰਦ ਕਟਿਆ ਤੇ ਹੋ ਨਹੀਂ ਸਕਿਆ ਬਸ ਖਾਨਗਲ ਕੀਤਾ ਜਮਾਇਆ ਨੂੰ ਬੇਜਰਾਜ ਕਰੇਗਾ ਉਸ ਸਾਰੇ ਨੂੰ ਹਲੋ ਹੋ ਗਿਆ ਜੇ ਅੰਦਰ ਆਵੜੀ ਆਇਆ ਦਰਵਾਜ਼ਾ ਆ ਗਈ ਪਰ ਵੀਰ ਆਇਆ ਕਿਨਗਲ ਚੌਟੀਆਂ ਚੌਟੀਆਂ ਬਸੂਸ ਆਏ ਹੱਟ ਚੌਟੀਆਂ ਚੌਟੀਆਂ ਨੂੰ ਸੁਣੀ ਰਹੇ ਹੋਏ ਇੱਕ ਦੀ ਗੱਲ ਸੁਣ ਕੇ ਬਸਬਸ ਆਵਾਏ ਹੱਟ ਸਭ ਬਕਾਊ ਬੋਲ ਕਰਤਾ ਸਿੱਖ ਚਲ ਬਕਾਊ ਗੌਣਨ ਹ੍ਰਿਦੇ ਗਏ ਜੋ ਚੀਜ਼ ਖਰੀਦੀ ਜਾਵੇ ਉਹ ਚੀ ਵੀ ਜਾਂਦੀ ਸੱਚ ਨਾਲ ਵੇਚਿਆ ਜਾ ਸਕਦਾ ਤਾਂ ਵਿਕਦਾ ਕਿਤੇ ਦੇਖਿਆ ਸੱਚੇ ਦਾ ਰੋਲੇ ਨਹੀਂ ਕੋਈ ਵਿਕੇ ਦਾ ਦਾਣਾ ਮੋਲੋ ਹਲੂੜਦਾ ਹੁੰਦਾ ਸਾਡੇ ਦਾ ਬੋਰ ਦਊ ਕੋਲ ਕੀ ਬੋਰ ਬਾਉਂ ਦੇ ਸਾਡੇ ਤੂੰ ਖਰੀਦ ਲੈ ਚਾਹਿਆ ਸੱਤ ਤੋਂ ਸਾਹਿਬ ਜਦੈ ਨੂੰ ਕੀ ਖਰੀਦ ਸਕਿਆ ਕੋਈ ਖਰੀਦ ਲੈ ਚਾਹਿਆ ਪੰਚੀ ਪਾਜਰ ਨੂੰ ਨਹੀਂ ਖਰੀਦ ਸਕਿਆ ਕੋਈ ਖਰੀਦ ਲੈ ਚਾਹਿਆ ਬਣੀ ਸਲ ਨੂੰ ਨਹੀਂ ਖਰੀਦ ਸਕਿਆ ਕੋਈ ਬਦੀ ਰਾਤ ਸਤੀ ਰਾਤ ਅਰੇ ਉਹ ਦੇਖਿਆ ਪਹਿਲਾਂ ਵੀ ਦੇਖਿਆ ਬਣਾ ਗਏ ਨੇ ਇਹ ਲਈ ਉਹ ਮੁੱਢੀ ਸਕੇ ਇੱਕ ਰਿਤੇ ਆ ਜਾ ਸਕਦਾ ਰਿਤੇ ਜਾ ਸਕਦਾ ਕਹਿੰਦਾ ਇਹ ਗੁਰੂ ਦੇ ਆਜਾਦ ਹਾਂ ਤਾਂ ਕਿਵੇਂ ਕੰਨ ਤੇ ਜੋ ਪਾਈਏ ਨਹੀਂ ਤੋਲ ਸੋਨੇ ਨਾਲ ਤਾਂ ਹੀ ਮਿਲਦਾ ਅਸ਼ਰਬੀ ਹੁੰਦੀ ਅਸੇ ਸੋਨੇ ਦੀਆਂ ਲੋ ਉਲਤਾ ਸਿੱਕੇ ਵੀ ਇਹਨਾਂ ਨੋਟਾਂ ਦੇ ਕਾਗਜ਼ਾਂ ਦੇ ਨੇ ਇਹ ਆਹ ਲੋਹੇ ਦੇ ਸੋਨੇ ਦਾ ਹੋ ਵੀ ਜ਼ਿਆਦਾ ਕੀਮਤੀ ਹੋਣਾ ਨਾ ਕੰਨ ਪਾਈਏ ਨਹੀਂ ਤੋਲ ਮਨ ਦੇ ਰਾਮ ਨਿਯੋ ਹੈ ਬੋ ਆਪਣੇ ਮਨ ਵਿੱਚ ਸਤਿਮੁਰਕੇ ਬਾਗ ਫੈਰ ਜਦ ਆਵੋ ਬਿਕ ਗਿਆ ਉਹਦਾ ਕੀ ਲੈ ਗਿਆ ਪਹਿਨਾ ਆਪਣਾ ਵਿਚਾਉ ਦਾ ਉਹ ਬੰਦੇ ਵੇਚਿਆ ਬਰੇ ਵਗਿਆ ਉਹ ਕਿਸੇ ਦੇ ਆ ਗਿਆ ਜਿਹੜਾ ਆ ਬਿਕਿਆ ਉਹਨੇ ਖਰੀਦਿਆ ਉਹਨੇ ਖਰੀਦਿਆ ਖਰੀਦਣ ਖਰੀਦਣ ਰਾਮ ਦਾ ਸਰ ਰਾਮ ਦੀ ਸ਼ਰੂ ਦਿੱਤੀ ਗਿਆ ਇਹ ਮਿਲੀ ਹੈ ਤਾਂ ਕੀ ਮਿਲੀ ਹੈ ਸ਼ਰਨ ਮਿਲੀ ਹੈ ਸਤਗੁਰੂ ਦੀ ਸ਼ਰਨ ਮਿਲੀ ਉਹਦੇ ਬੋਲੇ ਆਪਣਾ ਕੇ ਨੌਕਰੀ ਤਾਂ ਮਿਲੇਗੀ ਜੇ ਕਿਸੇ ਸੇਵਾ ਕਰਦੇ ਅਰਦਾਹ ਦੇ ਨਹੀਂ ਬਹੁਗਾ ਘਰ ਵਿੱਚੋਂ ਤਾਂ ਐਂਟਰੀ ਸੇਵਕ ਬਣ ਕੇ ਮਿਲੀ ਹੈ ਇਹਦਾ ਮਤਲਬ ਇਹ ਹੈ ਮੈਂ ਆਪਣੀ ਰੱਖਿਆ ਉਹ ਜੋਈ ਵੀ ਜਾਊਗਾ ਭਾਈ ਜਾਊਗਾ ਆਪਣੇ ਘਰ ਕਹਿੰਦਾ ਆਪਣੇ ਘਰ ਕਹਿੰਦਾ ਉਹਨੂੰ ਵੀ ਅਰੇ ਇਹ ਕੂਰ ਕੀ ਤੋਂ ਕੋਦਾਂ ਦੇ ਜਾਂਦਾ ਹੈ ਹੀ ਤੂਈ ਉਹ ਠੀਕ ਹੋਊਗਾ ਇਹ ਸਾਰੇ ਘਰ ਤੇ ਨਹੀਂ ਲੱਗ ਪਰ ਤਾਂ ਦਿਨ ਸਰਵਾ ਗੱਡਿਆ ਉਹਦਾ ਵੀ ਹੈ ਰੇਦਾ ਹੈ ਪਰ ਮਾਲਕ ਨਹੀਂ ਹੁੰਦਾ ਆਪਣੇ ਉਹ ਮਾਲਕ ਹੋਈ ਪਤਾ ਨਹੀਂ ਕਿ